ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭੂ ਕੋ ਮੂਲ ਤਿਸ ਪ੍ਰਭੂ ਕੋ ਮੂਲ ਨਮ ਹੁੰਦਾ ਸਾ ਹਾਂ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਦੀ ਕਿਰਪਾ ਤੂੰ ਸੰਸਾਰ ਗੱਲ ਨਹੀਂ ਆਈ ਹੂੰ ਹੂੰ ਕਹਿ ਰਹੇ ਵੇ ਜੀਤੇ ਬਿਆਨਾ ਤੇਰੀ ਹੂ ਦਾ ਹੂ ਦਾ ਰਹੀ ਜੀਵਨ ਤੇਰੀ ਹੁੰਦਾ ਤੇਰੀ ਹੋਂਦ ਸਭ ਰਾਜ ਪ੍ਰਗਟ ਜੀਤੀਏ ਸ਼ਰੀਰ ਨੂੰ ਤਾਂ ਹੂੰ ਤੇਰੀ ਹੋਂਦ ਹੋਂਦ ਪ੍ਰਗਟ ਕਰਦੀ ਹੈ ਘਰ ਵਿੱਚ ਜਿਆਦਾ ਆਉਦਾ ਦੋ ਹਿੱਦੇ ਚਲੋ ਉੱਥੇ ਤੋਂ ਹੋ ਜਾਂਦਾ ਗਰਭ ਚਾਹੇ ਆਦਮੀ है उसका ध्यान दो ने सोच ध्यान फड़के दिखाओ दो ध्यान फड़ना अर मान फड़ना एक जले ध्यान फड़ले ननगले ध्यान फड़ना एक तरह का मामला है जिसे हां ਉਹ ਤਾਂ ਹੋਰ ਕੋ ਡਰਬ ਹੋਰ ਤਰ੍ਹਾਂ ਦਾ ਜਿਹੜਾ ਬਖਤਾ ਬੈਠਾ ਬੂਰੇ ਆਪਣੇ ਬੈਠਾ ਜੋ ਕਮਜ਼ੋਰ ਹੈ ਸਾਹਮਣਿਆ ਉਹਨੂੰ ਫੜ ਕੇ ਰੱਖਦੀ ਹੈ ਜਿਹੜੀ ਸਾਹਮਣਿਆ ਜੇ ਚਾਹੇ ਉਘਾੜ ਦੂਗਾ ਇਹਦਾ ਧਿਆਨ ਤੇ ਮਜ਼ਬੂਤ ਹੈ ਉਹਦਾ ਧਿਆਨ ਫੜ ਕੇ ਰੱਖਦੀ ਹੈ ਇੱਥੇ ਫਤੇਗੜ ਬੜੂਆ ਮੈਂ ਸਾਥ ਨਾ ਰਖਿਆ ਹੈ ਕਟਨੇ ਦੀ ਗੱਲ ਹੈ ਸਾਇ ਨਪੇ ਦੀ ਉਹ ਸੀਗਾ ਐਨਟਾਈਜ ਯੂਪੀਆ ਦਾ ਨਪਾਇ ਮਾਸਟਰ ਫੇ ਚਲੋ ਫਤੇਗੜ ਚਲੇ ਜੇ ਉਹ ਕਹਿੰਦੇ ਗੱਲ ਕਹਿੰਦੇ ਚਲੋ ਫਤੇਗੜ ਚੱਲਣਾ ਮੈਂ ਕਹਾ ਮੈਂ ਤਾਂ ਜਾਂਦਾ ਨਹੀਂ ਨਹੀਂ ਅਨਗਜਾ ਕਲਾਸਾਂ ਵੀ ਸ਼ੁਰੂ ਕੀਤੀਆਂ ਸੀ ਭਾਵੇਂ ਮੈਨੂੰ ਜਰੂਰ ਜਾਂਦਾ ਸੀ ਉਹ ਉੱਥੇ ਮੈਂ ਮੱਥੇ ਲਗਣਗੇ ਕੀ ਫਾਇਦਾ ਕਹਿੰਦਾ ਯਾਰ ਆਪਾਂ ਘੜੋਂ ਉੱਧਰ ਜਾਣਾ ਉੱਚੇ ਪਿੰਡ ਉੱਥੇ ਹੀ ਆਉਗੇ ਉਹ ਸਵੇਰੇ ਇਹ ਬੋਲਿਆ ਉਹ ਘੋੜਾ ਮੈਂ ਕੀ ਛੋੜਨਾ ਸੀ ਉਹ ਜਾਣਾ ਆਪਣਾ ਉੱਥੇ ਅਹ ਹਰਦੇਵ ਜਿਉ ਦੂ ਲੋੜਾ ਉਹ ਜਾ 4 ਵਜੇ ਲੱਗਿਆ ਇਹਨਾਂ ਤੇ ਸਟੇ ਲੱਗਿਆ ਜਿਵੇਂ ਮਾਗਰ ਕੁਝ ਵੀ ਦਾ ਕਾਲਜ ਹੈ ਉਹ ਇੱਥੇ ਸਟੇ ਸੀ ਉਹ ਇੱਥੇ ਚ ਸਵੇਰੇ ਬੋਲਿਆ ਉਹ ਮੈਂ ਕਿਹਾ ਯਾਰ ਸੁਣ ਤਾ ਕੋਈ ਕੋਣ ਆਜੀ ਉਸੇ ਹੁਣ 4 ਵਜੇ ਤੱਕੇ ਸਾਰੇ ਲੋਕ ਕੋਈ ਇਧਰ ਪਿਆ ਹੁੰਦਾ ਕੋਈ ਉਧਰ ਪਿਆ ਹੁੰਦਾ ਥੋੜ੍ਹ ਨਾਲੇ ਥੋੜ੍ਹੇ ਹੁੰਦੇ ਨੇ ਆਸਾ ਦੀ ਵਾਰ ਵਾਲਾ ਉਹਨੇ ਆਸਾ ਦੀ ਵਾਰ ਲਈ ਸੀ ਸਵੇਰੇ ਤਵਾਵਿਲ ਆਉਂਦਾ ਤਾਂ ਥੋੜ੍ਹ ਥੋੜ੍ਹੇ ਨਾਲ ਅਗਾਲੀਆਂ ਤੇ ਵੀ ਦਿੰਦਾ ਤਾਂ ਵੀ ਕਾਹਨੇ ਦੇ ਤੂੰ ਸਾਡੇ ਸਿਰ ਤੇ ਸਾਤੇ ਕਵਾਲਾ ਹੀ ਜਾਂਦਾ ਤੇ ਚਲ ਰਗਾ ਉੱਥੇ ਜਾ ਕੇ ਬੈਠੇ ਤੇ ਸੁੱਤੇ ਜਾ ਕੇ ਸੇਹ ਤੇ ਮੈਂ ਜਿਵੇਂ ਆ ਆਪਣੇ ਸਰਬੱਤ ਦੇ ਖੋਸ ਤੇ ਜੋ ਉਹ ਸੇਹ ਤਾਂ ਬੁਰੀ ਸੀ ਉਹ ਮੈਂ ਅਸੀਂ ਉਹਦੇ ਨਾਲ ਧਿਆਨ ਨਾਲ ਸੁਣਦੇ ਸੀ ਗੱਲ ਜਦੋਂ ਉਹ ਅਕੀਆ ਕੁਬਾਰ ਗਲਗਲ ਨਾ ਕੇ ਉਹ ਆਪਣਿਆਂ ਨੇ ਪ੍ਰਭਾਵਿਤ ਕਰਦਾ ਸੀ ਉਹਨੂੰ ਛੋੜਨ ਵਾਲਾ ਚਾਹੀਦਾ ਸੀ ਸਰੋਤਾ ਉਹ ਵੀ ਚੱਗਾ ਬਲਾਰਾ ਬਧੀਆ ਹੋ ਤਾ ਨਾ ਰਕ ਤਖੜਾ ਹੁੰਦਾ 14 ਹੁੰਦਾ ਗੱਲ ਸੁਣ ਚਾਹੇ ਦੁਜਮੇ ਜੋਰ ਛਲਿੰਗ ਚੰਦਰਾਵਲ ਤੇ ਆਇਆ ਮੈਂ ਸ਼ਰਮਾਉਂਦਾ ਬਹੁਤ ਫੜ ਗਿਆ ਫੇਰ ਅਦੀ ਉੱਠ ਕੇ ਆ ਗਿਆ ਉਹ ਗਿਆ ਉੱਥੇ ਦੇਦਾ ਠੀਕ ਆ। ਜਦੋਂ ਜਮਨ ਜੋਰੀ 흘ੀ ਚੰਦੋਂ ਕਾਨ ਕਸ਼ਨ ਜਦੋਂ ਪਿਆ ਮੈਂ ਇੱਥੇ ਬੈਠਾ ਤੇ ਉਹ ਉੱਥੇ ਦੇ ਦਾਂ ਕਿ ਚੱਲ ਛੋਟੀਆਂ ਮੋਟੀਆਂ ਬਾਕੀ ਤਾਂ ਗਲਤੀਆਂ ਜਿਹੜੀਆਂ ਨੇ। ਬਾਕੀ ਤਾਂ ਕੋਈ ਗੱਲ ਨਹੀਂ ਉਹ ਕਾਨ ਸਭ ਸਾਰੇ ਕਰ ਦੇਈ। ਇੱਥੇ ਦੇਖਾਂਗੇ ਕੀ ਜਾਂਦਾ। ਜੇ ਹੈ ਵੀ ਇਹ ਦੇਖੀਏ ਕੁਛ ਨਹੀਂ। ਸਭ ਹੋ ਗਿਆ। ਰੋ ਚੁਟਕਲੇ ਸੁਣਦਾ ਹੋਰ ਕੁਛ ਨਹੀਂ ਹਾਂ ਉਹ ਕਮੇਡੀ ਕਮੇਡੀਆਂ ਦਾ ਸਰ ਫਜ਼ਲ ਚੁਟਕਲੇ ਤੇ ਕੁਛ ਨਹੀਂ ਹੂੰ ਸੰਨ ਨੂੰ ਹਟਾਈ ਜੇ ਜੋ ਵੀ ਰੰਤਿਆਨ ਹੈ ਿਆਨੋ ਖੜ ਗਿਆ ਤਾਂ ਜੇ ਤੋ ਬੈਠੇ ਸੱਤ ਕਹਾਣੀ ਦਿਲਦੀ ਹਾਂ ਜੀ ਅੰਤ ਚ ਸਾਰੋ ਹੁੰਦਾ ਜਿਹਦੇ ਮੂਰੇ ਅਸੀਂ ਮਤਲਬ ਹੈ ਜੇ ਟੀਚਰ ਦਾ ਆਪਣੇ ਜਿਹੜਾ ਸਟੂਡੈਂਟ ਹੈ ਗੱਲ ਕਰਦਾ ਉਹ ਬਸ ਆਪ ਤੋਂ ਕਟਕ ਦੇ ਸਾਹਮਣੇ ਜੇ ਚੌਥੀ ਦੇ ਨਾਂਕ ਕਹਿੰਦਾ ਪਹਿਲੀ ਦਿਨ ਦੇ ਪੜਾ ਦੂਗਾ ਉਹ ਪਤਾ ਵੀ ਇਹਦਾ ਜਿਆਦਾ ਔਲੀ ਦਿਵਸਾਂ ਨੂੰ ਜਾਂਦਾ ਉੱਚਾ ਤੁਹਾਨੂੰ ਮੇ ਓੱਖਾ ਚੜਦਾ ਫਿਰ ਰੁਕ ਜਾਂਦਾ ਰੁਕਣਾ ਲੱਗ ਜਾਂਦਾ ਵਿਚਾਰ ਸਮਝ ਆਉਂਦਾ ਕਿ ਪਾਣੀ ਰੁਕਣ ਲੱਗਿਆ ਉਹ ਧਿਆਨ ਮੁਖੜ ਜਾਂਦਾ ਉੱਠਣ ਲੱਗ ਜਾਂਦਾ ਹਾਂਜੀ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਗਲ ਔਖੀ ਹੈ ਔਖੀ ਨਹੀਂ ਹੈ ਕਿਵੇਂ ਪ੍ਰਗਟ ਕੌਣ ਪ੍ਰਗਟ ਚਿੱਤ ਦੇ ਤੂੰ ਤਾਂ ਘਰੇ ਹੈ ਬੁੱਧੀ ਚਿੱਤ ਦੇ ਅਤੇ ਮਨੂ ਚਕੌਣ ਦੀ ਪ੍ਰਕਿਰਿਆ ਚੱਲਦੀ ਹੈ ਹੂੰ ਨੌਂ ਕੇ ਦਾ ਦੀ ਲੈ ਸਤਿ ਆਦੀ ਕਿਰਤ ਜੀ ਜੀ ਮਜਾ ਨਾਲ ਤੂੰ ਸੱਚਾ ਪ੍ਰਗਟ ਹੈ ਜਿਵੇਂ ਬਾਪ ਦੀ ਵਜ੍ਹਾ ਨਾਲ ਔਲਾਦ ਪ੍ਰਗਟ ਹੈ ਬੁੱਢੇ ਤੇ ਹੀ ਲੋਨੇ ਆਪਾ ਜੇ ਮਾਂ ਬਾਪ ਨਾਲ ਹੁੰਦੇ ਤੁਸੀਂ ਕਿਥੋਂ ਦੇ ਸਰੀਰ ਕਰ ਚਲੋ ਗੱਲ ਤਾਂ ਆਹੀ ਪਰ ਸਾਡੇ ਵਾਲੀ ਗੱਲ ਥੋੜੀ ਜੀ ਇਹ ਠੀਕ ਹੈ ਜੇ ਪ੍ਰਸਾਦ ਤੂੰ ਪ੍ਰਗਟ ਸੁਣ ਜਾ ਸਤਾਹੀ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਉਹੀ ਸਲਸ ਵਿੱਚ ਗਿਆ ਮਾਤਾ ਪਿਤਾ ਅੱਜ ਕੱਲ੍ਹ ਕੋ ਸਾਥ ਕੇ ਇੱਥੇ ਜਾਣਾ ਹੈ ਉਹਦਾ ਜੋ ਮਸੂਈ ਮਸੂਝੇ ਪਰ ਆਗਲ ਸੱਚੀ ਹੈ ਜੇ ਪ੍ਰਸਾਦ ਤੂੰ ਪ੍ਰਗਟ ਸਭਸਾਰ ਜਿਦੀ ਭਾਈ ਕਿਰਪਾ ਨਾਲ ਤੇਰੀ ਹੋਉ ਦਾ ਸੰਸਾਰ ਵੀ ਤੇਹੀ ਹੋਂ ਦਾ ਹੈ ਇਸ ਪ੍ਰਭੂ ਨੂੰ ਮੂਲ ਅਨੁਸਾਰ ਇਸ ਪ੍ਰਭੂ ਕੋ ਵਰੋਹੀ ਬਸਾਰਨ ਜੇ ਜਿਹੜਾ ਐਸਾ ਪ੍ਰਭ ਹੋਵੇ ਜਿਹੜਾ ਸਾਡਾ ਵਜੂਦ ਹੈ ਜਿਹੜਾ ਉਹਦੀ ਵਜ੍ਹਾ ਨਾਲ ਵਜੂਦ ਹੈ ਤੇ ਫਿਰ ਸਾਡਾ ਵਜੂਦ ਹੈ ਇਹਨਾਂ ਫਿਰ ਬਗਲੇ ਨਾਲ ਉਹਦੇ ਵਿੱਚ ਅੱਗੇ ਤਾਂ ਹਮ ਸਕੇਲਾ ਹੀ ਆਵਾਜ਼ ਉਹਦੇ ਪਰਗਟੇ ਉਹਦੇ ਪਰਗਟੇ ਨਹੀਂ ਹੈ ਸੰਸਾਰ ਚ ਪ੍ਰਗਟ ਇੱਥੇ ਐ ਸੰਸਾਰ ਪ੍ਰਗਟ ਗਰਭ ਚ ਨਹੀਂ ਐ ਮਾ ਇਹ ਵੀ ਧਿਆਨ ਆ ਹਾਂ ਇਹ ਰਹੀ ਗੀਸੀ ਗੱਲ ਗਰਭ ਚ ਮਨੁੱਖ ਹੈ ਨਹੀਂ ਅੱਡਾ ਹੈਗਾ ਪ੍ਰਗਟ ਨਹੀਂ ਐ ਪ੍ਰਗਟ ਨਹੀਂ ਤੇ ਪ੍ਰਗਟ ਕਿਵੇ ਉਹ ਰਾਜ ਤਾਂ ਰਿਹਾ ਉੱਥੇ ਉਹ ਧਿਆਨ ਨਾਲ ਜੁੜਿਆ ਹੋਇਆ ਬੋਲਣਾ ਲੈ ਲੈ ਹੋਈ ਐ ਕੋਤਲੇ ਲਗੇ ਜਾਉ ਥੜੀ ਪਰਗਟਾ ਹੈ ਅੱਲਾਹ ਦਾ ਪਰਮਾ ਜਾਨ ਕਰਦਾ ਹੈ ਜਦ ਤ੍ਰਿਸ਼ਨਾ ਲਗਦੀ ਹੈ ਜਦ ਰੋਇਆ ਜਾ ਪਰਗਟ ਕੀਤਾ ਨੂੰ ਕਹਿੰਦਾ ਰੋਣਾ ਚਾਹੀਦਾ ਆ ਰਹਿ ਗਿਆ ਸੀ ਵਿੱਚ ਪੋਗਾ ਮੈਂ ਕੋਈ ਜੇ ਕਰਦਾ ਮੈਂ ਉਹ ਦੁਬਾਰਾ ਸ਼ਾਇਦ ਨਾ ਰੋਕ। ਤਾਂ ਹੀ ਬੜੇ ਕਿ ਜਦ ਤੱਕ ਮਤਲਬ ਆ ਨਰਾਜ਼ਾ ਦੀ ਉਹ ਰੋੜੀ ਰਾੜੀ ਸਾਰੀ ਪੱਟ ਕੇ ਹੁਣੇ ਕਰ ਲੀਏ। ਹਾਂ। ਐ ਸੰਸਾਰ ਆ ਉੱਥੇ ਸੰਸਾਰ ਹੈ ਜਿੱਥੇ। ਨਾ ਸੈਗਲ ਸੰਸਾਰ ਹੈ ਸੈਗਲ ਸੰਸਾਰ ਸੈਗਲ ਸੰਸਾਰ ਕਹੇ ਕੇ ਵੀ ਗਨ ਸੰਸਾਰ ਤੇ ਬਾਹਰ ਹੈ ਉਹ ਲੋਗ ਹੀ ਹੋ ਰੇ ਬਾਦਰੋਗ ਹੈ ਉਹ ਆਮਿਤ ਲੋਗ ਹੈ ਇਹ ਲੋਗ ਹੋਰ ਬੇਤ ਲੋਗ ਦੇ ਵਿੱਚ ਸੰਸਾਰ ਮਿਤ ਲੋਗ ਸੰਸਾਰ ਕਹਿੰਦੇ ਉਹ ਲੋਗ ਹੋਰ ਉਹ ਤਾਂ ਤਾਂ ਬਗਾਰਦਾ ਤਬੀਸਰ ਨਜ਼ਰ ਆ ਰਹੇ ਉੱਥੇ ਤੇ ਸਾਰੇ ਤਬੀ ਤਬੀਸਰ ਸਾਰੇ ਜਿਹਨੇ ਸਾਰੇ ਤਬੀਸਰ ਵਾਸਤੇ ਆਇਆ ਇੱਥੇ ਵਾਸਤੇ ਆਇਆ ਫਰੋੜਾ ਇਹਦਾ ਨੇ ਕੌਣ ਕਰਦੇ ਨੇ ਇੱਥੇ ਕਿਤੇ ਕਰਦੇ ਨੇ ਕਿਤੇ ਕਰਦੇ ਨੇ ਫਿਰ ਉਹ ਕਈ ਗੋੜ ਕਿ ਲੇਕਾ ਉਹਨਾਂ ਕੋਲ ਤੇਰੇ ਦੋਪਰ ਨਾ ਥੰਡਾ ਕੋਈ ਦੱਸੇ ਤਾਂ ਪੈਗਾ। 1 ਕਰੋੜਾਂ ਅੰਗੜੇ ਤੇ ਆਉਦੇ ਨੇ ਉਹ ਕਿੱਥੇ ਨੇ ਇੱਥੇ ਕਿੱਥੇ ਨੇ ਤੇ ਉਹ 1 ਕਰੋੜਾਂ। ਪੈਸੇ ਦਾ ਧਾਰੇ। ਕੋਈ ਸਭ ਜੀ ਭਜਿਆ ਜਾਂਦਾ ਘਰ ਨੂੰ ਦਾ ਕੋਲ ਤੁਤ ਨੂੰ ਜਾਂਦਾ ਰੁਕੇ ਸੇ ਜਾਂਦਾ। ਫਿਰਦੇ। ਨੇ। ਇੱਥੇ ਤਾਂ ਰੋਲੇ ਫਿਰਦੇ ਨੇ। ਚਿੰਤਾ ਦੇ ਵਿੱਚ ਘਰ ਦੇ ਤੋਂ ਦਿਆਂ ਦੇ ਵਿੱਚ ਕੋਈ ਕਹਦਾ ਜਣਾ ਬਿਮਾਰ ਹੈ ਕਹਿੰਦਾ ਕੁਝ ਬਿਮਾਰ ਹੈ ਕੋਈ ਆ ਬਿਮਾਰ ਹੈ ਸਮਝਿਆ ਕਿਸੇ ਜਿੰਤਾ ਤਾਂ ਮਹਿਲਾ ਬੁੱਧੀ ਕਰੀ ਜਾਂਦਾ ਸਾਰਾ ਸੰਸਾਰ ਇਹ ਹੈ ਸਤਾਰ ਦੁਆਪਰ ਸੰਸਾਰ ਨਹੀਂ ਹੈ ਦੁਆਪਰ ਬਾਹਰ ਅਤ੍ਰੇਤਾ ਦਾ ਵੈਸੇ ਹੀ ਤੇਵ ਲੋਕ ਹੈ ਇਹ ਗੱਲ ਨਵਿਦਾ ਨਾ ਕਹਿ ਤੂੰ ਬੋ ਜਿਹੇ ਪ੍ਰਸਾਦ ਤੇਰਾ ਪ੍ਰਤਾਪ ਰੇਮਣ ਮੂੜ ਤੂੰ ਜੇ ਪ੍ਰਸਾਦ ਤੇਰਾ ਪ੍ਰਤਾਪ ਸਨਾ ਦਾ ਪ੍ਰਗਟ ਹੈ ਚਲੋ ਤਾਂ ਪ੍ਰਗਟਾ ਸਾਰਾ ਹੀ ਹੈ ਹੁਣ ਕਿਸੇ ਦਾ ਪ੍ਰਤਾਪ ਹੈ ਕਿਸੇ ਦਾ ਹੈ ਨਹੀਂ ਅਲੱਗ ਲੱਗਨੇ ਨਾ ਕੁਝ ਜਿਹੜਾ ਰਾਜਾ ਹੈ ਜਿਹੜਾ ਗੁਰੂ ਹੈ ਉਹਦਾ ਤਾਂ ਪ੍ਰਤਾਪ ਹੈ ਉਹ ਸੁਬੋਧਨਾ ਆਪਣੀ ਮਨ ਨੂੰ ਸਾੜੀਏ ਬਣ ਜੁੜੀ ਸਾਡੇ ਚਾਰਾਂ ਪਧਰ ਤੋਂ ਸੁਬੋਧਨਾ ਉਹ ਕਹੇ ਉਦੋਂ ਰਾਮਰੇ ਤਾਂ ਹੈ ਦੀ ਰਾਮ ਰਾਮ ਨਿਵਾਸਾ ਜੀ ਕਮਟਾ ਸੀਰੋ ਰਾਮ ਰਾਧਾ ਬੰਨਿ ਮਿਵਾਸਾ ਜੀ ਵੀ ਧਿਆਨ ਰੱਖਣਾ ਰਾਮ ਜੀ ਐਵੇਂ ਨਹੀਂ ਕਹਿੰਦਾ ਕਿ ਤੇ ਹੈ ਉਹ ਨਹੀਂ ਰਾਮ ਰਾਉਤ ਸੇਰਬੋ ਸ੍ਰੀ ਜਾਂਦਾ ਤਾਤੂ ਦਾ ਤਾਤੂ ਦਾ ਸੂਰ ਹੈ ਤਾਤੂ ਦਾ ਦੂਰ ਹੈ ਨਹੀਂ ਜੀ ਕਹਾਂਗੇ ਕਿ ਗੁਰੂ ਅੰਗਦ ਸਾਹਿਬ ਨੇ ਮੁੰਡਕਲੇ ਕਰੇ ਮਹਗੁਰੂ ਗੁਰੂ ਆਪ ਕਰਦੇ ਸੀ ਉਹ ਕਹਾਂ ਲਖਮਾ ਜੀ ਗੁਰੂ ਕਹੋਣਾ ਤੂੰ ਕਿਉਂ ਕਹੋਣਾ ਉਹ ਛੜਾ ਜੀ ਮੇਰੇ ਪੜਨ ਦੇ ਦੀਆਂ ਨਾ ਉਹ ਤਾਂ ਛੱਡ ਕੇ ਆ ਦੇਗਾ ਕੋਈ ਉੱਥੇ ਕਰਨਾ ਆਇਆ ਸੀ ਗੁਰੂ ਕਹਾਂਗਾ ਕਰੇਗਾ ਸੰਗ ਤੇ ਇਕੋ ਕਿ ਤੂੰ ਕਹਾਂਗਾ ਨਹੀਂ ਹੱfte ਹੱfte ਤੁਹਾਡੇ ਕੋ ਗੁਰੂ ਕਹੁੰਦੇ ਸੀ ਉਹ ਪ੍ਰਚਾਰ ਕਰਦੇ ਤੇ ਨਾ ਵੀ ਕਬ ਛੱਡੋ ਤੁਸੀਂ ਆਪਣਾ ਇਹ ਕੰਮ करो, क्योंकि ਉਹ ਸਾਡੇ ਨਾਲ ਉਸ ਕਿਉਂਕਿ ਸਾਦਾਕ है, क्योंकि ਕਿਉਂਕਿ आदमी करता तो ਦਾ ਦੂਰ ਬਲਾਉ ਨਹੀਂ ਸੀ ਪ੍ਰਚਾਰਕ ਆਦਮੀ ਨਾ ਹੋ। ਜੇ ਦੁਆ ਕਰਦਾ ਤਾਂ ਬਾਕੀ ਬੰਦੇ ਜਾਂਦਾ ਸੀ। ਚਲੋ ਸੰਗਤ ਕਰਿਆ ਗੁਰੂ ਅਮਰਦਾਸ ਨੂੰ ਪਰਵਾਣੇ ਕਹਿੰਦੇ ਉਹਨੂੰ ਪਰਵਾਣ ਨਹੀਂ ਕੀ। ਇਸ ਗੁੱਸੇ ਜਿੱਲਾ ਤੂੰ। ਤੇ ਬੇਇੱਜ਼ਤੀ ਕਰਤੀ ਹੈ। ਆਪੇ ਸਮਝ প্রচার ਦਾ কিউচার লোকاں کراماتاں یہ پرچار karde تے کنے دکھاوه کرامات جے گروہ کرامات کوئی حد نہیں اپنی کراماتا جوڑیاں ہویاں نے ایتھے جی بھی نہیں او کرتا جی یوں نہیں انا ٹھیک ہو گیا جی ہو رہی تھی ٹھیک ہو گیا جی اے جھوٹ ہے جے بول رہے ہون تے یہ نال জ্ঞান دا پرچار نہیں ہوندا انہاں دا جھوٹ دا کراماتاں دا پرچار ہوندا ہے ਜਦੋਂ ਸਾਥ ਕਰੇਗਾ ਯਾ ਠੀਕ ਹੋ ਗਿਆ ਦੇਖੋ ਜੀ ਰੋਜ਼ ਟੀਵੀ ਤੇ ਤੁਸੀਂ ਰੋਜ਼ ਜੀ ਜੀ ਧੁੰਦੇ ਆ ਆ ਪ੍ਰਚਾਰ ਕਰਦੇ ਸੀ ਪੁੱਛੀ ਗੱਲ ਕਰਦੇ ਉਹਨੂੰ ਬੁਰੀ ਉੱਥੇ ਗੱਲ ਕਰਦੇ ਹੋਏ ਉਹਨੂੰ ਵੀ ਆਉਣਾ ਨਹੀਂ ਉਹ ਪ੍ਰਚਾਰ ਇਹ ਪ੍ਰਚਾਰ ਜੋ ਆਮ ਲੋਕ ਕੋ ਕਰਾਵਾ ਦੇ ਪ੍ਰਚਾਰ ਨੂੰ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਜਿਵੇਂ ਟੀਵੀ ਤੇ ਫੈਰਦੀ ਆ ਉਹ ਬਮਾਦੀ ਸਾਡਾ ਜੀ ਕਬੂਕਾਰ ਠੀਕ ਹੋ ਗਿਆ ਸਾਡਾ ਉਹ ਠੀਕ ਹੋ ਗਿਆ ਮੈਨੂੰ ਬੀ ਇਹਦੇ ਨਾਲ ਇਹਦੇ ਨਾਲ ਉਹਨਾਂ ਨਾਲ ਸੰਬੰਧ ਜ਼ਿਆਦਾ ਨਹੀਂ ਸੀ ਛੂੜ ਜੋ ਬੁਲਾਉਂਦੇ ਸੀ ਆਪਣੇ ਬੰਦੇ ਨਹੀਂ ਜਿੱਤੇ ਮੱਝੀ ਜੋ ਬਿਆਨ ਕਿਹੜਾ ਪਤਾ ਹੁੰਦਾ ਕਿਹੜੇ ਪਿੰਡ ਦੂਰੋਂ ਬੁੱਢੇ ਲੈ ਲੈ ਕੇ ਉਹਨੂੰ ਦੇ ਦੇ ਕੋਈ ਕੰਮ ਠੀਕ ਹੋ ਗਿਆ ਦੇਖਦੇ ਨੇ ਮਾਰੇ ਮੋਟੇ ਇਹ ਉਹਨਾਂ ਰੂਪ ਸੰਬੋਧਨ ਕਰਕੇ ਰਹੀ ਹੈ ਬੰਦੇ ਸ੍ਰੀ ਚੰਦ ਕਿਹੜਾ ਗੱਲ ਦਾ 3 3 ਭਸਮ ਸਭ ਨੂੰ ਹੋਏ ਭਸਮ ਆ ਗਈ ਤੇ ਬਾਕੀ ਸੰਸ ਦੀ ਗੱਲ ਗਾਹ ਆਉਗੀ ਸੰਤ ਕੌਣ ਹੁੰਦਾ ਕੀ ਹੁੰਦਾ ਇਹ ਉਹਨੂੰ ਤਾਂ ਅਖੇ ਟਾਰਗੇਟ ਇਹ 4 ਇੰਚ ਕਿੰਨੇ ਸੈਂਟਰ ਦੇ ਤੇ ਦੁੱਧ ਸੈਂਟਰ ਨੇ ਅੱਜ ਅੱਜ ਤਾਂ ਪੰਜੇ ਨੇ ਅੱਜ ਛੱਡੋ ਤੁਸੀਂ ਉਦੋਂ ਤਿੰਨ ਨੇ ਸਨ ਉਦੋਂ ਪਰਸਾਤਾ ਆਪੇ ਨੇ ਉਦੋਂ ਬਰਸਾਦੀ ਇਹਨਾਂ ਕੋਲੋਂ ਕਿਹਾ ਗਿਆ ਜਸ ਬਾਤ ਚਲ ਨਾਂ ਮੁਰਦਾ ਆਪੇ ਹਾਜ਼ਰ ਹਾਂ ਲਿਖੀ ਗਈ ਆ ਉਦੋਂ ਦੇ ਕੋਲੇ ਹੀ ਤੇ ਲਿਖੀ ਸੋਕਾ ਗੁਰੂ ਰਾਮ ਸਾਹਿਬ ਦੀ ਸੰਫਾਗਾਂ ਤੇ ਬਾਤ ਜਾਂਦਾ ਮਰਸਰਾਂ ਦੇ ਕੋਲ ਹਾਂ ਪ੍ਰਚਾਰ ਹੋ ਜਾਏ ਸਾਈਡ ਤੇ ਆਪਣੇ ਘਰ ਕਰੀ ਜਾਂਦੇ ਹੁਣ ਬਾਹਰ ਬੜੇ ਭਾਈ ਇਹਨਾਂ ਦੇ ਕਿਆ ਘਰ ਤੋਂ ਪੁਕੀ ਕੀ ਐ ਨਾ ਚਲ ਦੋਲਾਂ ਨੇ ਦੂਜੇ ਨਾਲ ਪਿੱਛੇ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਵੀ ਬਹੁਤ ਕੁਝ ਗੁਰੂ ਰਾਮਦਾਸ ਨੇ ਪ੍ਰਚਾਰ ਕੀਤਾ ਸੀ ਫਤੂਏ ਕੱਢਣਾ ਸੰਤਾਂ ਦੇ ਖਿਲਾਫ ਉਹਨਾਂ ਦੀ ਬਾਣੀ ਵੀ ਬਹੁਤ ਕੁਝ ਹੈ ਇਹਨਾਂ ਦੇ ਖਿਲਾਫ ਪਿੰਨਾ ਦੇ ਜਿਹੜੇ ਅਸੀਂ ਜੋਗੀਆਂ ਜੱਗੀਆਂ ਦੀ ਗੱਲ ਕਰਦੇ ਹਾਂ ਨਾ ਫਿਰ ਉਹਨਾਂ ਦੇ ਖਿਲਾਫ ਕੁਝ ਨਹੀਂ ਹੈ ਤੂਬਾ ਤੋਂ ਪਰਹਾਉਂਦੇ ਇਹ ਜਿਹੜੇ ਕਰਦੇ ਇਹਨਾਂ ਦੇ ਖਿਲਾਫ ਹੈ ਅਸੀਂ ਸੂਈ ਹਿਦਮਤ ਮੋੜ ਕੇ ਥੀ ਲਖਣੀ ਜੀ ਆਪਣੇ ਰਿਤੇ ਨੂੰ ਸੱਜਦੇ ਹਾਂ ਸਾਡਾ ਦੇ ਵੀ ਅੰਤ ਨੇ ਅਸੀਂ ਦੇਖੋ ਜੇ ਕਿਸੇ ਪਾਕਿਸਤਾਨ ਦੇ ਸਾਡੇ ਕੋਲ ਅੱਤਵਾਦੀ ਭੇਜਦੇ ਸੀ ਅੱਤਵਾਦੀ ਨੂੰ ਕਹਿੰਦਾ ਪਾਕਿਸਤਾਨ ਤੇ ਹਮਲਾ ਕਰਨਾ ਉਹਨਾਂ ਦਾ ਸਾਡੇ ਚ ਆਵੜਿਆ ਕੋਈ ਬੰਦਾ ਜਾਸੂਸ ਜਾਸੂਸ ਫੜ ਕੇ ਉਹਦੇ ਤੇ ਕਿਵੇਂ ਚਲਾਵਾਂਗੇ ਸੀ ਨਾ ਜਾਸੂਸ ਨੇ ਸਾਡੇ ਕੋਲ ਸਾਡੇ ਤੋਂ ਬੋਲ ਜੁਏ ਨੇ ਜਿਹੜੇ ਬੋਲਦੇ ਨੇ ਇਹੋ ਕੋਲਟ ਪ੍ਰਚਾਰ ਕਰਦੇ ਨੇ ਜਿਹੜੇ ਕਹਿੰਦੇ ਨੇ ਕਿल्ली ਗੱਡੀ ਹੋਈ ਹੈ ਉੱਥੇ ਜਿਨ੍ਹਾਂ ਗੁਰੂ ਅਮਰਦਾਸ ਬੰਨ ਕੇ ਕੇਸ ਦ압 ਕਰਦੇ ਸੀ ਜਿਹੜੇ ਦੇਰੀ ਦੀ ਗੱਲ है कर रहे ਰੁਕ ਵੱਢਣੀ ਹੈ ਰੁਕਕਟਾ ਇਹਦਾ ਵੇਲੇ ਸਾਡੇ ਬਤੇ ਆਇਆ ਤਾਂ ਖਾਸ ਤੈਨਾਂ ਨੇ ਕੀਤਾ ਰ ਅਰਥੁ ਦੇ ਨਰਸਿੰਘ ਨੇ ਕੀਤਾ ਉਹਨਾਂ ਹੁੰਦਾ ਰਹੇ ਉਹ ਚਲੇ ਨੇ ਸ੍ਰੀਮਦ ਸ਼ਾਸਤਰ ਵਾਲੇ ਦੇ ਦੂਏ ਉਹ ਦੋ ਹੀ ਸ਼ਾਸਤਰ ਵਾਲਾ ਸਾਨੂੰ ਸਾਡੇ ਤੇ ਲਾਗੂ ਕਰਤਾ ਜਿਹੜਾ ਉਹ ਸੀ ਝੂਠੇ ਗਿਆ ਸੀ ਸ਼ਾਸਤਰਾਂ ਨੂੰ ਸਿਮਰਤ ਸ਼ਾਸਤਰ ਪੁੱਤ ਪਾਪ ਵਿਚਾਰ ਦੇ 30 ਸਾਲ ਨਾ ਜਾਣੀ ਸਾਡੇ ਪੁੱਤ ਪਾਪ ਬੁਝ ਲਿਆ ਤੇ ਆਨੇ ਪੁੱਤ ਪਾਪ ਦਾ ਪ੍ਰਚਾਰ ਕਰਦੇ ਨਾ ਕਿ ਨਹੀਂ ਕਰਦੇ ਸਿਮਰਤ ਸ਼ਾਸਤਰ ਦੇ ਗੱਟੇ ਨੇ ਜਦੋਂ ਅਸੀਂ ਕਹਿੰਦੇ ਪਾਪ ਨੂੰ हमरे ਬਸ ਨਹੀਂ ਤੇ ਬੇਕਾਦਰ ਨਹੀਂ ਕਹਦੇ ਬਸ ਕਿਉਂ ਨਹੀਂ ਇਹ ਹਮਲਾਉਣਾ ਦੇ ਜਾਣਦੇ ਨੇ ਪਾਪ ਉਹ ਬੜਾ ਨਾਲ ਦੇ ਇਹ ਟਾਰਗੇਟ ਸਾਰੀ ਗੁਰਬਾਣੀ ਇੱਥੇ ਰੱਖਣੀਆਂ ਆਸੀ ਇਹਨਾਂ ਤੇ ਇਕਦਾ ਸਾਡੇ ਵਿੱਚੋਂ ਤੂੰ ਤਾਂ ਦੁੱਧ ਪਾਣੀ ਦਾ ਪਾਣੀ ਹੋ ਜੂ। ਪੁਰਾਣੀ ਹਿਸਟਰੀ ਕੋਲ ਐ ਜਿਹਨਾਂ ਜਿਹੜੇ ਧੜੇ ਜਵਾਨ ਐ ਐਲਾਨ ਕਰਦੇ ਬੜੇ। ਤਾਂ ਤੇ ਦੁਹੇ ਨੂੰ ਪਤਾ ਹੋਵੇ ਵੀ ਉਹ ਫੜਾ। ਤਰਦਾ ਅੱਡ ਕਰ ਤੋ। ਵਰਡ 'ਚ ਪਤਾ ਲੱਗ ਜੀ ਬੇ ਜਿਵੇਂ ਸਹੀਆ ਸੁਣੀ ਲੈ। ਅੱਡ ਧੜੇ ਖੜੇ ਨੇ ਤੋ। ਖੜੇ ਨਾ ਹੋਏ। ਐਂ ਫੜਨ ਫੜਦੇ ਨਾ। ਸਾਨੂੰ ਕੋਈ ਰੋਣਾ। ਕੀ ਇੱਜ਼ਤ ਮਿਲਦੀ ਨਾ ਦੁਨੀਆ 'ਚ ਇਹਨਾਂ ਨੂੰ ਇੱਜ਼ਤ ਮਿਲਦੀ ਹੋਣੀ ਇਹਨਾਂ ਨੂੰ ਹੀਰਾਣਾ ਭੇਜਿਆ ਆਰਐਸਏ ਉਹਨਾਂ ਨੇ ਬੜੀ ਬੁਖਰ ਹੋ ਕੇ ਕਹਿਣਾ ਵੀ ਠੀਕ ਨਹੀਂ ਅੰਦਰ ਕੇ ਮਰਜੀ ਕਰੀ ਜਾਣ ਅਲਾਨੀਆਂ ਤੌਰ ਤੇ ਨਿਕਣਾ ਵੀ ਠੀਕ ਰੱਖ ਨੇ ਕਿਉਂ ਉਹਨਾਂ ਦਾ ਫਾਇਦਾ ਹੈ ਰਾਜ ਨਹੀਂ ਮੰਗਦੇ ਰਾਜ ਮੰਗਦੇ ਨੇ ਉਹਨਾਂ ਤੋਂ ਅੰਦਰ ਇਹਨਾਂ ਦੇ ਖਰਾਬ ਹੋ ਰਾਜ ਨਾਮਕਣ ਦੀ ਜਿਹੜੀ ਪੋਲਿਸੀ ਹੈ ਕਿੱਤਾਂ ਗੁਰ ਮਸਲਾ ਮੈਸਾਂਦੀ ਹੈ ਇਹ ਕਿਹੜਾ ਰਾਜੇ ਦਾ ਵਿਰੋਧ ਹੈ ਸਾਡੇ ਨਾਲ ਨਹੀਂ ਹੋਊਗਾ ਨਾ ਹੋਊਗਾ ਰਾਜ ਪ੍ਰਬੰਧ ਸਾਡੇ ਹੱਕ ਚ ਆਊਗਾ ਜਦ ਅਸੀਂ ਪ੍ਰੇਮ ਦੀ ਗੱਲ ਕਰਦੇ ਹਾਂ ਅਸੀਂ ਨਫ਼ਰਤ ਦੇ ਖਿਲਾਫ਼ ਹਾਂ ਅਸੀਂ ਸਭ ਨੂੰ ਕਹਿੰਦੇ ਹਾਂ ਵੀ ਸਾਰੇ ਸਿੱਖ ਨੇ ਸਾਰਿਆਂ ਦੇ ਵਿੱਚ ਅੰਤਰ ਆਤ ਹੁੰਦੀ ਆਵਾਜ਼ ਹੈ ਜਿਹੜਾ ਮੰਨਦਾ ਸਿੱਖ ਹੈ ਉਹ ਨਹੀਂ ਮੰਨਦਾ ਉਹ ਸਿੱਖ ਹੈ ਜੀ ਕੜਗਰੀ ਦੌਰਖੀਆਂ ਨੇ ਤੀਜੀ ਹੋ ਗਈ ਈ ਤੇ ਗੁਰਮੁਖਾ ਗੁਰਮੁਖਾ ਚਾਰ ਵਰਨ ਦਾ ਵਾਹ ਮਹਾਰਾਜਪਤੀ ਸਾਡੇ ਨਾਲ ਜਿਹੜੀ ਸਰਕਾਰ ਬੰਦੀ ਹੈ ਚਾਰ ਵਰਨ ਜਿਹੜਾ ਮੰਗਦਾ ਗੋਪਤ ਚਾਹੇ ਬੋਲ ਰੋ ਰਾਂ ਕਰਕੇ ਸੇ ਤਾਂ ਉਹ ਟਿਕਾਣਾ ਚਾਰ ਵਰਨ ਜਿਹਦੇ ਤੇ ਇਹ ਮਦਨੇ ਬਾੜ ਤੇ ਟਿਕਾਣਾ ਕਰਦੇ ਚਾਰ ਵਰਨ ਤੇ ਪਿੱਛੇ ਜਾਂਦੇ ਵਰਨ ਉਹ ਜਿੱਤੇ ਜੋ ਮਰ ਜਿਓ ਬੁਕਰਦੇ ਅਲਾਨਿਆ ਧੁਦਰ ਘਰ ਨਾਲ ਜੋ ਵਰ ਜਿਉੜੇ ਇਹਨਾ ਨੂੰ ਮੁਖਰੋ ਕਰੀ ਦੱਸੋ ਤੇ ਸਗੋਂ ਭਾਵੇਂ ਫਤਿਹ ਕਾ ਜਿਹੜੀ ਇਹਨਾਂ ਦੇ ਪਿਛੇ ਅੱਗੇ ਕੁਤਲਤੀ ਹਦੀ ਦਾ ਇਹ ਕਹਾਂਗੇ ਸਾਡੇ ਸਾਡਾ ਵੀ ਅਸੀਂ ਸਿੱਖ ਨਹੀਂ ਕਹਿਤਾ ਵੀ ਸਿੱਖੇ ਨਹੀਂ ਤੁਸੀਂ ਅਲੀ ਤਾਂ ਖੇੜਦਾ ਜੋ ਵਰਤੀ ਉਹ ਪਾਈਨਾ ਜੇ ਬੇਦਨ ਨਾ ਸਾ ਤੇ ਤੁਸੀਂ ਖਿਲਾਫ ਹੋ ਤੁਸੀਂ ਉਹਨਾਂ ਜੇ ਵੇਚ ਕੇ ਲਓ ਉਲਟਾ ਪਤਾ ਹੀ ਲੱਗ ਗਿਆ ਆ ਮੇਰਾਂ ਦੇ ਵਿੱਚ ਜਦ फड़े गए, ਫੜੇ ਗਏ ਹੁਣ फड़े गए, वो ਗਏ ਉਹ ਆਪੇ ਗਈ ਲੈ ਨਾ ਉਹ ਤਾਂ ਕਹਿ ਵੀ ਲੋੜ ਹੈ ਇਹਨਾਂ ਤੋਂ ਸਬੂਤ ਹੈ ਸਭ ਪਤਾ ਹੀ ਹੈ ਫਿਰ ਉਸ ਅਧਦੀ ਹੋਵੇ ਸਰਕਾਰ ਉਹਦੇ ਵਿੱਚ ਇਹ ਕੰਮ ਹੋਵੇ ਅਸੀਂ ਤਾਂ ਚਾਹਾਂ ਇਹਨਾਂ ਤੇ ਸਿਕਿਪਰਸਿਆ ਦੀ ਜੇ ਵੀ ਸਿਕਿਨਾ ਸਾਂ ਦੇ ਖਲਾਫ ਨੇ ਅਜੇ ਵੱਡੇ ਨੇ ਵੀ ਸਿੱਕੇ ਥੋੜੇ ਗਏ ਆਪਣੀ ਜਵਾਨੀ ਸੇ ਖੈ ਦੇ ਗਏ ਜਿਹੜਾ ਇਹਦਾ ਪ੍ਰਚਾਰ ਉਹਦੇ ਮੁਤਾਬਕ ਸਿੱਖੀ ਦੇ ਨੇ ਨੁਕਸਾਨ ਕੀ ਤੇ ਸਿੱਖੀ ਨਾ ਅਜਾ ਹਸਾਂ ਲੱਗ ਗਿਆ ਸਾਡਿਆਂ ਦਾ ਕੀਤਾ ਜਿਹੜਾ ਇਹ ਨਾਲਾ ਪ੍ਰਚਾਰ ਉਹਦੇ ਹਿਸਾਬ ਨਾਲ ਬਿਠੇ ਅਨੇ ਸੇ ਵੱਡੇ ਕੇ ਬਹੁਤ ਖਰਾਬ ਜਾਂਦੀ ਹੈ ਇਹਵੇਂ ਹੋ ਜਾਂਦੀ ਹੁੰਦੀ ਹੈ ਹਾਂਜੀ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂਰਤ ਤੱਕ ਉਹ ਜਾ ਜੇ ਪ੍ਰਸਾਦ ਤੇਰਾ ਪ੍ਰਤਾਪ ਪ੍ਰਤਾਪ ਹੈ ਉਹਨਾਂ ਦਾ ਉਹਨਾਂ ਦੇ ਕੋਲ ਸਦਤ ਆਉਦੀ ਹੈ ਗੁਰੂਆਂ ਨੇ ਕਹਿੰਦਾ ਨੇ ਵੀ ਭਾਈ ਗੁਰੂਆਂ ਦੇ ਬੱਚੇ ਨੇ ਗੁਰੂ ਨੇ ਬੱਚੇ ਹੁਣਦਾ ਹੀ ਪ੍ਰਤਾਪ ਹੈ ਉਹਦਾ ਦਾ ਪ੍ਰਤਾਪ ਹੈ ਜੇ ਜਨਮੋਂ ਤੇ ਮਿਲਿਆ ਤਾਂ ਹੀ ਪ੍ਰਤਾਪ ਹੈ ਉਹਦਾ ਦਾ ਪ੍ਰਤਾਪ ਹੈ चल बड़े मोटे ज्ञान भी है गुरु का पैदा होयांदा ज्ञान दा भी फर्क है करीब से कर पैदा होवे जो सुन ले ओते सुनाया ता बहुत कुछ है चल मन्ने है सुना है सब कुछ है जान सब कुछ है पर प्रचार दे नाम वाया करके लिहाज करके और यो कोगड़ कबीर कहंदा आई कोगड़ है रोर گونگٹ جینی کاڈے آنکھ کی بال رہیں توڑے آٹے آڑے آ گیا ہو او منہ دیکھ لیا اب یہ بولتے پوجا کر دینے اپنوں کون پتھر پتی پتی جیوں کاڈو پنا ہے کہہ دو بھی چلتے ہے کہہ دینے پتھر چوں پا لی دا کہہ دو پا لی دا ਵਿਚਾਰਾ ਆਪਣੇ ਕਹੇ ਤੇ ਕਿਹੜਾ ਕੰਮ ਮੁਰਦੀ ਚ ਪੈ ਜੂ ਕੰਪਰੋਮਾਈਜ਼ ਕਰ ਲਿਆ ਅੰਦਰੋਂ ਜਹ ਜਾਣਦੇ ਸੀ ਵਿਚਾਰਾ ਜੀ ਤਾ ਆਪਣੇ ਹੁੰਦੇ ਜਿਹੇ ਲਾਜ ਬਣੀ ਹੋਈ ਹੈ ਆਪਣੇ ਤੇ ਲਾਭਰੀ ਹੈ ਉਹ ਤੇ ਬਣਾਉਣ ਵਾਸਤੇ ਉਹ ਝੂਠਾ ਖਾਣਾ ਬਹਿ ਗਿਆ ਮਿੱਠੇ ਦੇ ਲਾਲਚ ਨੂੰ ਮਿੱਠੇ ਦੇ ਲਾਲਚ ਨੂੰ ਝੂਠਾ ਖਾਣਾ ਬਹਿ ਗਿਆ ਉਹ ਬਿਠਾ ਸੀ ਮਾਇਆ ਮਿੱਠੀ ਸੀ ਆਯਾ ਤਾਂ ਉਹ ਬਿਠਾ ਸੀ ਉਹ ਝੂਠ ਖਾਣਾ ਪੈ ਗਿਆ ਉਹਦੇ ਵਿੱਚ ਕੰਨ ਚ ਲੈਣਾ ਉਹਦੇ ਵਿੱਚ ਝੂਠ ਨਾਲ ਨਹੀਂ ਸਾਜ ਪਾ ਖਾਈ ਗਈ ਆ ਆ ਪਗੜਾ ਉੱਤੋਂ ਤੋਂ ਹੀ ਪੌਮਲਾ ਪਤਾ ਸਿਰ ਉੱਤੋਂ ਪਮੰਦੇ ਹੀ ਆ ਨਾਲਿਆ ਕਹਿੰਦੇ ਸੰਗਤਰੋਂ ਕਹੀ ਜਾਂਦੇ ਨੇ ਕਹਿੰਦੇ ਸੰਕੋਚ ਕੇ ਸੰਕੋਚ ਜਿਹੜਾ ਦੁਆ ਸੇ ਖੋਦਣਾ ਕਹਿੰਦਾ ਠੀਕ ਆ ਪਰ ਚਲੋ ਆਪਣੀ ਆਪਾਂ ਕਾਲੂ ਬਗੜਦੀਆਂ ਨਾ ਅੱਧ ਬਚਦੀ ਦਾ ਦੱਸੀ ਜੋ ਅੱਧ ਗੱਦੀ ਫੇਰ ਦਾਂਗ ਗੱਲ ਬਾਣੀ ਦਾ ਵੜਦਾ ਹੀ ਦੇ ਆਪਣੇ ਕੋਲ ਤਾਂ ਆਉਂਦੇ ਹੀ ਨੇ ਜਿਹੜੀਆਂ ਗੱਲਾਂ ਜਾਂ ਜਿਹਦੇ ਨਾਲ ਟਿਕੇ ਰਹੇ ਤੇ ਜੋ ਇਹੀ ਤੱਕ ਦੀ ਖਾਤਰ ਵਰਤੀਆਂ ਇਹੀ ਤੱਕ ਦੀ ਵਰਤੀ ਆ ਅਣਕੀਸੋ ਦਾ ਪਹਿਲਾਂ ਆ ਅਕਾਲੀ ਫੂਲਾਸਾਂ ਵੜਦੇ ਉਹ ਜਾਦੇ ਨੂੰ ਵੇ ਦਿਨ ਉੱਢਾ ਕੇ ਗੁਰਦੁਆਰੇ ਚ ਪਾੜਿਆ ਗੱਲ ਬਾਣੀ ਦਾ ਵੜ ਜਾਈ ਕਿੱਕਤਾ ਬਣਦੇ ਨੇ ਵਿਰੋਧਤਾ ਦੀ ਕਰਨਗੇ ਉਹ ਕਹਿੰਦੇ ਚਲੋ ਬੜੀ ਜਾਂਦੇ ਬਾਣੀਏ ਪੜ੍ਹਦੇ ਨਾ ਪੜ੍ਹ ਕੇ ਹਟੋ ਬਲ ਫਿਰ ਜੇ ਕਹਿਤਾ ਪੜਦੇ ਸੇ ਗਰੀ ਬਿਲਕੁਲ ਛੱਡ ਦੇਣਗੇ ਪੜਦੇ ਸੇ ਪਹਿਲਾਂ ਵੀ ਸੀ RAMLAYE ਕੇ ਮੰਨੀਓ ਪੜਦੇ ਸੀ SRIJAN ਬਾੜੀਓ ਪੜਦੇ ਸੀ ਉਹਨਾਂ ਦਾ ਐਸੀ ਵੀ ਉਹ ਪਲ ਜਾਣਗੇ ਲੋਕ ਲਾਈਨ ਬਣ ਜੂਗੀ ਹੋਰ ਇਹ ਕੁਝ ਹੋ ਅਸਲ ਜਿਹੜੀ ਵਿਚਾਰਤਾ ਉਹਨਾਂ ਦੇ ਸੀ ਵਿਕਸ ਕਿਉਂਕਿ ਇਸ ਜੋ ਪਲਾਸਟਿਕ ਇਹ ਉਹ ਵਿਕਸਦਾ ਹੀ ਪ੍ਰਚਾਰਕ ਹੋ ਰਿਹਾ ਹੈ ਕੁਝ ਗੱਲਾਂ ਗੁਰਬਾਣੀ ਦੀਆਂ ਨੇ ਗੁਰਮਤਿਆਂ ਨੇ ਉਹ ਕੀ ਹੈ ਧੇਸ ਵਾਲੀ ਉਹ ਗੱਲਾਂ ਗੁਰਬਾਣੀ ਦੇ ਚਾਹ ਵਾਲੀ ਜਿਆਦਾ ਹੈ ਮੂਰਤੀ ਕੋਈ ਅਧਿਕਾਰ ਦੀ ਚਲੋ ਕਹਿੰਦੇ ਹਾਂ ਫਰੋ ਪਰ ਫਲਸਫੀ ਦਾ ਜਿਆਦਾ ਫਰੋ ਪਾਪ ਨੂੰ ਬਦਲੋ ਬਦਲਿਆ ਚਾਰ ਪਦਾਰਥ ਬੁੱਲੇ ਨਾਲੇ ਚਾਰ ਜੋ ਗਿਣਾਂ ਵਾਲੇ ਬੰਲੇ ਸੀਤਾ ਦਾ ਵਿਛੜ ਗਿਆ ਨਾ ਨਾ ਮਾਣੇ ਨਾ ਰਮਣੇ ਨਾ ਰੇ ਗੋਤੀ ਬਹੁਤ ਨਾਲ ਹੀ ਬੰਨ ਲਈ ਜਗਾ ਦੇਤੀ ਠੀਕ ਹੈ ਜੀ ਕੀ ਜੀ ਮੰਤ ਹੈ ਨਾਲ ਬਾਲਿਆ ਸਾਰਾ ਬੁੱਲੇ ਜੇ ਪ੍ਰਸਾਦ ਤੇਰਾ ਪ੍ਰਤਾਪ ਜੇ ਪ੍ਰਸਾਦ ਤੇਰਾ ਪ੍ਰਤਾਪ ਤੇਰੇ ਕੋਲ ਜੋ ਗਿਆਨ ਹੈ ਬੁੱਧ ਹੈ ਇਹਦੇ ਇਹੇ ਪ੍ਰਤਾਪ ਫੈਦੇ ਨਾਲੇ ਐਈ ਕਿਥੋਂ ਆ ਦਿੱਤੀ ਜੀ ਜਦ ਪਹਿਲੀ ਜੂਨ ਕਿਸ ਤਰ੍ਹਾਂ ਘੁੰਮਦਾ ਹੈ ਜੀ ਆਈਡੀ ਸਿਸਟਮ ਆਇਆ ਸਾਰਾ ਐਡੀ ਜੂਨਾ ਸਾਨੂੰ ਦਿੱਤੀਆਂ ਨੇ ਨਾਗ ਇਹਸਤ ਉਹ ਤਾਂ ਗੱਲ ਪਰਮੇਸ਼ਰ ਨੇ ਦਿੱਤੀਆਂ ਕਿਸੇ ਤੋਂ ਹੁਆ ਪਰ ਕਾਰਨ ਤਾਂ ਉਹ ਸੀ ਫਿਰ ਉਹ ਬੁੱਧ ਤੈਨੂੰ ਹਰ ਜਨਮ ਦੇ ਵਿੱਚ ਅਜੇ ਨਾਲ ਰਿਹਾ ਹੁਣ ਤਾਂ ਆਤਮਾ ਤਾਂ ਯਾਰੀ ਜੀਆ है, ਮਨ ਉਹਨਾਂ ਦਾ ਪ੍ਰਬੰਧ ਨੂੰ ਬਾਰ-ਬਾਰ ਬਾਰ-ਬਾਰ ਜੋਰ ਪਰਵਤ ਹੀ ਦੇ ਰਹੇ ਨੇ ਹੱਥ ਹੀ ਦੇ ਰਹੇ ਸ੍ਰੀ ਰਾਸਿਕ ਨੂੰ ਉਹਨਾਂ ਕਰਕੇ ਮੰਨ ਨੂੰ ਇਹਦਾ ਮਤਲਬ ਹੈ ਦੇਖੋ ਤੇ ਨਾਮ ਪਾਇਆ ਇਹ ਤਾਂ ਅੰਦਰੋਂ ਤੇ ਹੀ ਪਾਇਆ ਸੀ ਜਿਸਨੋਂ ਅੰਦਰੋਂ ਰਿਹਾ ਬਟ ਇਸ ਰੌਂਗ ਪੋਲਿਟਿਕ ਰਾਈਸ ਦਾ ਜਿਹੜਾ ਡਿਸੀਜਨ ਉਹ ਬੁੱਧੀ ਤਾਂ ਪੇਸ਼ ਹੁੰਦੀ ਉਹਦੇ ਦੋ ਜਾਂ ਤਿੰਨ ਚੀਜ਼ਾਂ ਲੈ ਕੇ ਇੱਕ ਆਇ ਇੱਕ ਆਇ ਇੱਕ ਆਇ ਜੋ ਕਿਹੜਾ ਠੀਕ ਹੈ ਅੱਲਾ ਫਿਰ ਦੱਸਦਾ ਜੀ ਅੱਜ ਪਤਾ ਲੱਗਦਾ ਵੀ ਕਿਵੇਂ ਪੜਾ ਲਈ ਜੇ ਤੁਸੀਂ ਕਿਹਾ ਵੀ ਬੁੱਧੀ ਮਨ ਨੂੰ ਸਮਝਾ ਰਹੀ ਹੈ ਉਹਦੇ ਅੱਜ ਪਤਾ ਲੱਗਦਾ ਕਿ ਇਹ ਕਿਵੇਂ ਪੜਾਉਂਦੀ ਹੈ ਬੁੱਧੀ ਰਹੀ ਹੈ ਮੈਂ ਦੱਸੂ ਪਈ ਮਾਇਦੇ ਸੁ ਆਪਣੇ ਉਹਦੇ ਬਾਪਾ ਨੇ ਬੱਚਾ ਉਹ ਨੂੰ ਤਾਂ ਪਤਾ ਨਹੀਂ ਇਹ ਮੁਜੱਦਦ ਦਾ ਬਾਪ ਦੀ ਗੱਲ ਆ ਜੀ ਜੰਮ ਹੈ ਉਹਨੇ ਦੇਖਿਆ ਨਹੀਂ ਉਹ ਮਾਦਾ ਸੁ ਉਹ ਤਾਂ ਆਏ ਆ ਤਾਂ ਇਹ ਨੂੰ ਕਹਦੇ ਬਹਾ ਕਰਦੇ ਨੇ ਕਹਦੇ ਮਿਸਤਰੀ ਕਹਿੰਦੋ ਨੇ ਇਹ ਜਿਹੜੇ ਕੋ ਹੋ ਜਾਂਦਾ ਫਿਰ ਇਸਤਰੀ ਆ ਫਿਰ ਬਣ ਜਾਂਦੀ ਸਮਾਜ ਤੇ ਕੋਈ ਨਾ ਮਨ ਨੂੰ ਤੱਕ ਲਾਇਆ ਦੂਰੇ ਫੇਰੇ ਹੌਲ ਤੇ ਮਰਸੀਏ ਇਹ ਦਰਿਆ ਉਹ ਕੰਤ ਹਾਲ ਕੋ ਫੁਕ ਛਾੜ ਅੰਤਲਾ ਬਣਾ ਹਾਲ ਕੋ ਸੁਖਾਣ ਦੇ ਬਾਬੰਦ ਹਾਲ ਕੋ ਸੁਖਾਣ ਕਰਕੇ ਅਸ ਸਾਰੀ ਸੁੱਖ ਇਹਨਾ ਕਰਕੇ ਸੱਚ ਨੂੰ ਤਿਆਗਦਾ ਰਹਿੰਦਾ ਹੈ ਕਿ ਜਾਲਿਆਰ ਖਾਲ ਲਾਂਗੇ ਕਰ ਲਾਂਗੇ ਐਨਾ ਤੋਂ ਬੰਦੋ ਐਨਾ ਗਰਾਮ ਨੂੰ ਉਹ ਜਿਹੜਾ ਪਿੰਨ ਕਰਦਾ ਰਿਹਾ ਪਿੰਨ ਕਰਦਾ ਰਿਹਾ ਫੈਸਲਾ ਉਹ ਜਦ ਜਿੱਦ ਨੇ ਬੰਨ ਬਣਾ ਲਾਦਾ ਆਲ ਸੁੱਖਾ ਦਾ ਤਿਆ ਕਰਦੇ ਛੱਡੋ ਪਰ ਤਾਂ ਫਿਰ ਇਹ ਨੂੰ ਤਾਂ ਇਹ ਦਾ ਭੁਖੜੇ ਨਹੀਂ ਇਹ ਦਾ ਤਾਂਤੇ ਨਹੀਂ ਇਸ ਗੱਲ ਦਾ ਪਰਮ ਸੁਖ ਪਾਉਣਾ ਜਦ ਪਰਮ ਸੁਖ ਪਾਈ ਗਈ ਇਹ ਤਾਂ ਬਦਿਆ ਸੁਖ ਹੈ ਤ ਵਧੀਆ ਜੱਦੀ ਬੈਠਾ ਘਟਿਆ ਦਾ ਹੀ ਬੈਠਣ ਪਾਇਦਾ ਨਹੀਂ ਗਿਆ ਵੀ ਤੋ ਕੋਠੀ ਜੋ ਬਾਹਰ ਨਿਕਲੇ ਜੰਗਲ ਚਲੇ ਜਾ ਇਹ ਤਾਂ ਗਿਆ ਨਹੀਂ ਅਲੂ ਸੁਖਾਂ ਅੰਦਾਜ਼ ਮਨ ਜੋ ਤਿਆਗ ਛਾ ਲੈਣਾ ਤੇ ਬਗਲ ਨਾ ਪਾਚੇ ਨਾ ਪਾਚੇ ਅਲੂ ਸੁਖਾਂ ਖਾਸਰ ਇਧਰ ਭੁੱਲ ਨਾ ਪਾਸੇ ਰਸਲ ਨਾ ਛਾੜ ਪਰਮ ਸੂਪਾਵਾਂ ਪਰ ਉਹ ਸਭ ਦਾ ਵਿਚਾਰ ਚ ਸਭ ਦਾ ਵਿਚਾਰ ਵਾਲੇ ਪਾਸੇ ਆ ਗਿਆ ਢੜਕਣ ਵਾਲੇ ਪਾਸੇ ਆ ਗਿਆ ਸਾਥ ਸਾਥ ਸਮਰੋਪ ਬੰਦ ਬਾਰੇ ਪਾਸੇ ਪਰ ਹੱਥ ਪੈਰ ਚਾਹੇ ਕਮਜ਼ਰ ਦਾ ਰਹੇ ਤਬੂ ਗਰ ਦੇਵੀ ਹਟਾਇਆ ਕਬੀਰ ਹਟਿਆ ਜਿੱਥੇ ਤਾਂ ਹੱਥ ਪੈਰ ਨਾ ਕਰੀਏ ਕਬੂ ਉਹ ਮਾਨ ਕਰਕੇ ਜਿਹੜੇ ਹੋਰ ਪ੍ਰੇ ਨੇ ਬਣਾਉਣਾ ਉਹ ਨਾ ਬਣਾਉ ਉਹ ਛੱਡ ਦੇ ਦੇ ਕਬੂਰੀ ਇਹ ਲੱਗਦਾ ਤਰ ਕੋਟ ਹੁੰਦਾ ਇੱਕ ਆਦਮੀ ਜੁੱਤੀ ਬਣਾ ਕੇ ਰੋਟੀ ਖਾ ਰਿਹਾ ਹੈ ਕਿੱਡੀ ਯੋਜਿਕਮਾ ਇਹ ਬਣੀ ਸੀ ਘਾੜੀ ਜਿਹੀ ਜੁੱਤੀ ਬਣਦੀ ਹੋਊਗੀ ਉਹ ਰੋਟੀ ਹੋ ਗਈ ਆਟਾ ਲੂਣ ਮਿਲਦਾ ਸੀ ਹੋਰ ਤਾਂ ਕੋਈ ਤਰਖਾਰੀ ਮਿਲਦੀ ਸੀ ਨਾਲ ਆਟਾ ਬਣ ਗਿਆ ਥੋੜਾ ਵਿੱਚ ਰੂੜ ਪੈ ਗਿਆ ਅਸਲੀਕਤ ਅੰਨੇ ਸੋਹਣ समान ਸਰੀ ਇਹ कुछ सी, जे ਹੈ ਤਾਂ ਪ੍ਰਾਉਡ ਵੀ भी ਸਜੂੜਨੇ ਦੀ ਬੋਲਦਾ ਕੀ ਲੋੜ ਸੀ सी ਉੱਡ ਬੋਲਣ ਦੀ ਉਹ ਹੁਣ ਇੰਨੇ ਪਦਾਰਥ ਨੇ ਹੁਣ ਕਿਹੜਾ ਸੌਦਾ ਸਸਤਾ ਹੈ ਬਈ ਅਸੀਂ ਫੇਰ ਕਿਹੜਾ ਕਹਿ ਤਾ ਵੀ ਜਿਆਦਾ ਪਦਾਰਥ ਨੇ ਹੁਣ ਤੁਸੀਂ ਲਾਪਰਵਾਹੀ ਕਰਦੋ ਲੋੜ ਦੀ ਇਹਦਾ ਸਾਰਾ ਇੱਕ ਉਡੀ ਹੈ ਅੱਡੇ ਲੋਟ ਤੋਂ ਲੈ ਕੇ ਜਿੰਨੇ ਵੀ ਕੋਈ ਬਦਲੇ ਜਾਇ ਕਹੇਤਾ ਉਹਨੂੰ ਕਹਿ ਰਹੇ ਹੇ ਵਿਦੋਇ ਕਰਦਾ ਜੇ ਪ੍ਰਭ ਤੇਰਾ ਪ੍ਰਤਾਪ ਰੇਮਨ ਅਜੇ ਨਹੀਂ ਪਾੜੀ ਮੋਟੀ ਅਗਲਾ ਮੇਰੇ ਕੋਲ ਜਿਹੜੀ ਮੈਂ ਤੈਨੂੰ ਦੇ ਰਿਹਾ ਉਹਦੇ ਕਿਰਪਾ ਨਾਲ ਹੈ ਤੇਰੇ ਨਾਲ ਲੱਗਿਆ ਫਰਾਨੇ ਦਾ ਮੁੰਡਾ ਜੰਮਦੇ ਦਾ ਹੀ ਰਾਜਾ ਨਾਂ ਲੱਗ ਗਿਆ ਵੀ ਇਹ ਰਾਜਾ ਹੈ ਜੀ ਜੇ ਰਾਜੇ ਦੇ ਘਰ ਜੰਮੇ ਜੰਮਦੇ ਦੇ ਹੋ ਗਿਆ ਬੋਰੀਆ ਆਇਛੋ ਛੋਟੇ ਨਿਆਣੇ ਦਾ ਇਹ ਨਵਿਦਾ ਰਾਜਾ ਤੇ ਜੰਮੇ ਰਾਜਾ ਜੇ ਪ੍ਰਸਾਦ ਤੇਰਾ ਪ੍ਰਤਾਪ ਉਹ ਜਿਹੜਾ ਚੌਥੇ ਪਾਛਾ ਦੇ ਘਰ ਜਾਣ ਬੁੱਲੇ ਜਾਂਦਾ ਹੀ ਰਾਜਾ ਹੈ ਨਾਨਕ ਦੇ ਜੰਮੇ ਜਾਂਦਾ ਹੀ ਰਾਜਾ ਸੀ ਅੱਜ ਵੀ ਸ੍ਰੀ ਜਾਨ ਦੇ ਰਾਜਾ ਰਾਜਾ ਹੀ ਹੈ ਨਾਨਕ ਦਾ ਗੁਰੂ ਹੈ ਰਾਜਾ ਦਾ ਹੈ ਚੇਲੇ ਬਣ ਕੇ ਸ੍ਰੀ ਜਾਨ ਦੁਨੀਆ ਵਾਸਤੇ ਸ੍ਰੀ ਚਲਦੀ ਬਹੁਤ ਇੱਜ਼ਤ ਹੈ ਦੁਨੀਆ ਦੇ ਲੋਕਾਂ ਵਾਸਤੇ ਸ੍ਰੀ ਜਾਨ ਦੇ ਇੱਕ ਛੋਟਾ ਜਿਹਾ ਬੱਚਾ ਹੈ ਸਾਰੇ ਹਿੰਦੁਸਤਾਨ ਦੇ ਸਿੱਧਾ ਨੇ ਭੁੱਲਿਆ ਕਿ ਜੇ ਇਹ ਸਾਨੂੰ ਦੇ ਦੋ ਅਸੀਂ ਇਹਦੇ ਚੇਲੇ ਬਣ ਜੰਦੇ ਆਂ ਕਬੀ ਕੀ ਉਹ ਨਹੀਂ ਸਿਰ ਨਾਂਗਰ ਕਰਕੇ ਨਾਂਗਰ ਸਿਰ ਨਾਂਗਰ ਦਾ ਬੋਲਦਾ ਨਾਂਗਰ ਕੇ ਨਾਂਗਰ ਤੋਂ ਖਤਰਾ ਸੀ ਕਿੰਨਾ ਖਤਰਾ ਸੀ ਉਹਨੇ ਦਾ ਖਤਰਾ ਲਾ ਲਿਆ ਜਿਹੜਾ ਗੁਰੂ ਬਣਾ ਦੋਆ ਨੂੰ ਗੁਰੂ ਨਹੀਂ ਮੰਨਦਾ ਕਿੰਨਾ ਕੁਛ ਗੁਰੂ ਖਤਰਾ ਕਰਦੇ ਨੇ ਹੁਣ ਰੋਕ ਪਰ ਉਹਨਾਂ ਨੇ ਕਿਹਾ ਕਿ ਸੇ ਨਵਨੀ ਬਟਣਾ ਜੋਖਮਤ ਖਤਮ ਕਰ ਦੂਗਾ ਨਾਨਕ ਪਹਿਨਾ ਭਗਤਾਂ ਤੋਂ ਤਾਂ ਬਚ ਜੋ ਮੁਝੇ ਬ੍ਰਿਸ਼ੀ ਹੋਉਂਦੀ ਸੀ ਅੰਦਰ ਸਭ ਦੇ ਸੁਲਕਦੀ ਸੀ ਇਹਨੇ ਫਿਰ ਵਜਾਤਾ ਪਾਫੜ ਪ੍ਰਗਟ ਨਹੀਂ ਸੀ ਸੁਲਕਦੀ ਦਾ ਸੀ ਗੋਦਾਨ ਕਹਿ ਨਹੀਂ ਗਈ ਸੀ ਮਾਰਪਈ ਕੋਲ ਲਾਣੀ ਉਹ ਉਹਨਾਂ ਦਾਦਾ ਘਰ ਆ ਜਾਓ ਭਜਾ ਕੇ ਜੇ ਤਾ ਤੂੰ ਹੀ ਨਿਕਲਦਾ ਦਾ ਘਰਾਂ ਚੋਂ ਬਰਤਲਾਂ ਹੱਥਾਂ ਪਏ ਤੇ ਤਾਂ ਦੇ ਵੀ ਵੀ ਲਾਦੇ ਦਿੱਤੇ ਤਾਂ ਹੀ ਚੱਲਣਾ ਹਾਲਤ ਸੀ ਮਾਝੇਤ ਕਰੋ ਉਸ ਵੇਲੇ ਉਹਨਾਂ ਦੀ ਤਰਸਯੋਗ ਹਾਲਤ ਸੀ ਪਰ ਨਾਲ ਕਹਿੰਦਾ ਆ ਗਈ ਹੈ ਹਾਂ ਜਿਹੜੀ ਜਿਹੜੀ ਐਕਚੁਅਲੀ ਜਿਹੜੀ ਹੈਗੀ ਜੋ ਹੈ ਇਸ ਦੀ ਹੈ ਸੋ ਬੋਲਣ ਜੋ ਦੇਖਿਆ ਕਿ ਕਿ ਆ ਉਹ ਸਾਰੀ ਹੋਤੀ ਹੈ ਜਿਹੜੇ ਕਹਿੰਦੇ ਸੀ ਗੁਰਬਾਣੀ ਅਨਸਾਰ ਹਿਸਤੀ ਸੋਧੋ ਗੁਰਬਾਣੀ ਦੀ ਹਿਸਤੀ ਉਹ ਦੱਸ ਦਿੰਦੇ ਸੀ ਵਾ ਜਿਹੜੀ ਸਾਨੂੰ ਮਤਲਬ ਅਸੀਂ ਦੱਸ ਦਿੰਦੇ ਆ ਅਸੀਂ ਬਾਕੀ ਰੱਗੀ ਲੈਣਾ ਮਾਰਾ ਦੇ ਕੋਲ ਸਾਖਤ ਆਪਡੀ ਹਿਸਟਰੀ ਆਫ ਲਵਲੈਂਡ ਸਾਡੇ ਗੁਰਮਖਾਨਿਆ ਹੈ ਅਹੀ ਦਾ ਫੁਰੂ ਦਾ ਰਾਣੀਓ ਦੇਖਣ ਹਾਂ ਰੇਵਨ ਵੂਡ ਤੱਕੋ ਜਾ ਰੇਵਨ ਵੂਡ ਵੀ ਕੇ ਮਨੋਂ ਮਾਤਰੋਈ ਕਰ ਰਿਹਾ ਹੈ ਲਾਪਰੋਈ ਕਰ ਰਿਹਾ ਹੈ ਮਾਤਾ ਆਪਣਾ ਮੇਂ ਕਹਿ ਰਹੀ ਹੈ ਉਹਦਾ ਵੀ ਤੇ ਆਪਣਾ ਵੀ ਤੇ ਮਨੇ ਇਹ ਮੇਂ ਜੁਦਾ ਵਾਨਾ ਹੈ ਜੁਦਾ ਨੇ ਮਨੇ ਦੋ ਮਨ ਨੂੰ ਮਨਾ ਰਹੀ ਹੈ ਉਹ ਪਿਤਾ ਮਾਤਾ ਤੇ ਕੋਰੇ ਹੈ ਕਹਿਣ ਸੋਣ ਦਾ ਦੂਜਾ ਹੋਣ ਇਥੇ ਮਾਤਾ ਪਿਤਾ ਆਤਾ ਪਤਾ ਦੋਨੀਆਂ ਨੇ ਕੋ ਆ ਕੰਗੋਦੂਜ ਕੰਗੋਦੂਜ ਹੇਮਨ ਬੂਡੂ ਤਾਂ ਕੋ ਜਾਪ ਰੇਵਨ ਬੂਡੂ ਤਾਂ ਕੋ ਜਾਪ ਉਹਨੂੰ ਉਹਨੂੰ ਸਮਝ ਜਾਣ ਜਿਹਨੇ ਪ੍ਰਸਾਦ ਉਹਨੇ ਕਾਰਜ ਪੂਰੇ ਜਾਪਦਾ ਤੁਸਾ ਸਤ ਉਹਨੂੰ ਦੇਖ ਉਹਨੂੰ ਸੁਝ ਉਹਦਾ ਦਰਸ਼ਨ ਕਰ ਸੋਵੀਏ ਦਾ ਰਸਨਾ ਜੋ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨਮਨ ਸਦਾ ਹਜੂਰੇ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਅੜਾ ਕਾਰਜ ਹੈ ਆਪਣਾ ਵਿਚਾਲੇ ਉਹਦੀ ਕਿਰਪਾ ਨਾਲ ਪੂਰਾ ਹੋਣਾ ਹੁਣ ਤੱਕ ਜਿਹੜੇ ਕਾਰਜ ਹੁਣ ਤੱਕ ਪੂਰਾ ਹੋਇਆ ਉਹਦੀ ਕਿਰਪਾ ਨਾਲ ਹੋਇਆ ਉਹ ਵੀ ਅਬ ਸੁਖਾਂ ਜਨੂ ਬਣ ਗਿਆ दुखा जानु मिल गया पिछला तार दिसिए जद दुखा जानु पडुगा ते तेरा और बारी, बारी बारी तेरे बारी-बारी होगी बारी-बारी हुण त तेरे वास्ते कर ले भावे जी जीत भावे हार तो कागज़ बहुत जनार रे कागज़ पूरे कागज़ पूरे हो लो आज देवी उन तेरी मर्जी ज्यों ने अगले ਇਥੇ ਤੱਕ ਸਾਰੀਆਂ ਜੁੱਲ ਪਾਣੇ ਚੁਰਕੇ ਪਾਣੇ ਚ ਤਾਂ ਇੱਥੇ ਤੱਕ ਕਾ ਗਿਆ ਇੱਕ ਥੱਲੇ ਡਿੱਪੇਗਾ ਹੁਣ ਮਸਾਸ਼ਾਲੇ ਕੰਮ ਕਾਜ ਜੂਰੇ ਹੁੰਦੇ ਆਏ ਨੇ ਬੁੱਢਾ ਹਰ ਕਿ ਦੇ ਵਿੱਚ ਚਾਹ ਇੱਕ ਘਟੇ ਵਾਸਤੇ ਹੋ ਜੀ ਹੁਕਮ ਨਾ ਕੋਲ ਲੀਪੇ ਹੁਕਮ ਨਾ ਕੜਤਾ ਦੁਬਾਰਾ ਲੀਪੋ ਨੀ ਤੋ ਕੜਤਾ ਕੁਝ ਵਸੇ ਜਾਣੇ ਕੋ ਨਵਾਬ ਨਹੀਂ ਉਹਦਾ ਮਾਦਨ ਕਹਿੰਦਾ ਛੰਗੜੀ ਛੇਤੀ ਕਰਦੇ ਨੇ ਮੇਰੇ ਵਿੱਚ ਬੱਟੇ ਨ ਕੋੜੀਆਂ ਕਹਿੰਦੇ ਲਕਾਲਾ ਆਏ ਤੇ ਪਰ ਆਏ ਤੇ ਚੱਲੇ ਅਸੀਂ ਬੈਠੋ ਤੁਸੀਂ ਹੋਰ ਚਾਰ ਸਾਲ ਤੁਸੀਂ ਬੈਠੋ ਅਸੀਂ ਚੱਲੇ ਅਸੀਂ ਚਾਰ ਪੰਜ ਕੋੜੀਆਂ ਪਿੱਛੋਂ ਆ ਗਏ ਦੇ ਨਿਕਲ ਗਏ ਪਿੱਛੋਂ ਆ ਕੇ ਗਿਆ ਨਿਕਲ ਜਾਂਦੇ ਨੇ ਇਹ ਵੀ ਆਖਰ ਨਾ ਆਣੇ ਰਾਸ ਤੂ ਤੂਹੇ ਕਹਾਂ ਉਹ ਹੈ ਹੁਕਮ ਕੀਨੂ ਰਾਸ ਆਜਵੇ ਆ ਜਿਹੜਾ ਛੋਟਾ ਹੀ ਮਾਰਦਾ ਉਹਨੂੰ ਰਾਸ ਆ ਗਿਆ ਸਮ ਉਹਨੇ ਕਿਹਾ ਕਾਂ ਉਹ ਕੋਈ ਬੈਠਾ ਥਲੇ ਉਸੇ ਕੋਠਰੀ ਚ ਈਓਨੇ ਉਸੇ ਗਿਆਨ ਲੈਣਾ ਗਿਆਨ ਗੁਰਾਂ ਦਾ ਸਾਹ ਕੇ ਗਿਆ ਗਿਆਨ ਹੈ ਨਹੀਂ ਥਲੇ ਸਭ ਨੂੰ ਯਾਦ ਹੈ ਜੰਗਤ ਥੱਲੇ ਗੱਡੀ ਆ ਥੱਲੇ ਬੁੱਧੀ ਤੇ ਬੜਬੁਲਟਾ ਕਾੜਦਾ ਔਰ ਮਦਲਾ ਗਿਆ ਜਾਨਵਰਾਂ ਦੀ ਵੀ ਕਕਲੋਦੀ ਆ ਜਾਂਦੀ ਛੋਟੀਆਂ ਗਲਾਸਾਂ ਦੋ ਵੀ ਹੋ ਜਾਂਦੀਆਂ ਗੱਡੀ ਹੋਰ ਹੀ ਕੋਈ ਹੋਣਾ ਜਾਨਵਰਾਂ ਦੀ ਕਈ ਵੈਰਾਈਟੀਆਂ ਨੇ ਫਿਰ ਉਸੇ ਕਿਸਮ ਦੇ ਜਾਨਵਰ ਹੋਰ ਵੀ ਨੇ ਜਿਵੇਂ ਬੱਕਰੇ ਸਾਡੇ ਇੱਥੇ ਵੀ ਨੇ ਜੰਗਲੀ ਵੀ ਨੇ ਉਹਨਾਂ ਦੇ ਕਈ ਵੈਰੀਟੀਆਂ ਨੇ ਬੱਕਰੀਆਂ ਨੇ ਇਹ ਹਿਰਲ ਵੀ ਨੇ ਇੱਕ ਨਾਲ ਦੇ ਹੈਗੇ ਤਾਂ ਕੀ ਲੈਣਾ ਉੱਤੇ ਇੱਧਰ ਨੂੰ ਹਾਂ ਜੇ ਇੱਧਰ ਨਹੀਂ ਮੈਂ ਵੀ ਨਾ ਜਾਂਦਾ ਤਾਂ ਚੰਗਾ ਸੀ ਕਿਉਂ ਜਾਂਦਾ ਨਹੀਂ ਇਹ ਜਾਣ ਲੱਗ ਗੀ ਫਿਰ ਗਾਂ ਸਵਾਲ ਖੜੇ ਹੋਣ ਲੱਗ ਜੂਦੇ ਬੇਮਤਲ ਉਹਨਾਂ ਦਾ ਬਸ ਬਸ तू भी पॉइंट रखते हो तो पीछे आज माया साला वैसा नहीं है जे प्रसाद तू पावे साच जेको प्रसाद तेरे कार्य पूरे किसे जानमन सदा हजूर कार्य पूरे जीने सच जब प्राप्तियोग आ पूरा ज्यादा है साच भी प्राप्ति होजुगी तब कार्य पूरा होजुगा जे प्रसाद तू पावे साच जय प्रसाद तेरे कार्य पूरे की पूरे जय प्रसाद तू पावन साच साच कबे बड़ुगा सच मिलया संतोषियां पैमानो संतोष के संतो hmm. संतो ना कोना सतोखी hmm. आगी भेज दी ए सतोखी होन नु निग्या कार्य पूरे कह के सच दी प्राप्ति दी गल कर ਸੰਤੋਖ ਦੀ ਪ੍ਰਾਪਤੀ ਸਤ ਸੰਤੋਖ ਦੀ ਪ੍ਰਾਪਤੀ ਕਾਜ ਪੂਰੇ ਹੈ ਪਰ ਉਹਦੇ ਵਾਸਤੇ ਬੰਦੂ ਹੈ ਜਲਾ ਹਤਿਆ ਕਰਨ ਨੂੰ ਕਮਾਇਆ ਲਾ ਅਪਣਾ ਵਾਇਾਕਤਾਂ ਆਯੋ ਦੀ ਮਰਜ਼ੀ ਤੋਂ ਐਂਟਰ ਹੁੰਦੀ ਆ ਮਰਜ਼ੀ ਮਰਜ਼ੀ ਨਾਲ ਹਿਲਦਾ ਜਮਾਇਆ ਮਾਂਤੇ ਇੱਛਾ ਨਾਲ ਪਰ ਐਂਟਰ ਹੁੰਦੀ ਆ ਅੰਦਰ ਇੱਛਾ ਨਾਲ ਹੀ ਹੋਵੇ ਐਂਟਰ ਦੀ ਲੋੜ ਨਹੀਂ ਐਸੇ ਜਾ ਲੋ ਸਾਡੇ ਬਾਦਰ ਤੇ ਹੀ ਰਲੇ ਹੋਣਗੇ। ਜਾਂ ਅਕਰੇ ਪੁਰਸਾ ਵਾਲੇ ਰਲੇ ਹੋਣਗੇ। ਬੰਦਾ ਉਹਨਾਂ ਦਾ ਉਹ ਤਾਂ ਦੇਖ ਕੇ ਵੀ ਉਹ ਵੀ ਛੱਡ ਦਿੰਗੇ ਜੇ ਵੱਧ ਚੀਜ਼ ਹੋਊਗਾ ਤੇ ਕੋਈ। ਇਹ ਹੀ ਆਦਮੀ ਹੋਊ। ਪੁਰਸੇ ਕਰਦੀ ਹੋਊ ਕੁਝ। ਜਿਵੇਂ ਰੌਲਾ ਪਿਆ ਸੀ ਨਾ ਚਾਰ ਬੇਟੀਆਂ ਆਈਆਂ ਸੀ ਤੇ ਅਬ ਆ ਉਹਦੇ ਸੀਗਾ ਰੌਂਡ ਬੁਲੇਟ ਚੱਲਣ ਵਾਲੇ ਬਾਹਰ ਵਈਆਂ ਸੀ ਪੇਟੀ ਗਈ ਫੁੱਟ ਰੌਂਦੇ ਰਿਹਾ ਬਾਹਰ ਉਦੋਂ ਫਿਰ ਉਹਨਾਂ ਨੇ ਫੁੱਟ ਕਰਤਾ ਮਾਲੀ ਸਰਕਾਰ ਦਾ ਅਤਵਾਦ ਤੇ ਫਲਾਉਣ ਦੇ ਪਹਿਲਾਂ ਦੀ ਗੱਲ ਹੈ ਫੁੱਟਾ ਦੰਦਾ ਨਾ ਲੈ ਆਇਆ ਖਬਰਾਂ ਦੇ ਇਹ ਕਹਿੰਦਾ ਮਾਇਆ ਆਇਆ ਜਦ ਗਿਆ ਪਤਾ ਹੀ ਨਾ ਲੱਗਣਾ ਤੱਕ ਇਹ ਮਾਲੀ ਆਇਆ ਸੀ ਕਿਥੋਂ ਨਹੀਂ ਆਇਆ ਸੀ ਉਹਦਾ ਇਹ ਸੁਣ ਜਾ ਚਾਹਤਾ ਸੀ ਨਾ ਦਾ ਨਾ ਇਹਨਾਂ ਸਭ ਨੂੰ ਕਰਨਾ ਪੈਂਦਾ ਸਰਕਾਰਾਂ ਚਲੋ ਛੱਡੋ ਪਰੇ ਕਹਿੰਦਾ ਮਤਲਬ ਇਹ ਜੇ ਖੁਦੇ ਚਾਹੁੰਦਾ ਹੋਵੇ ਬਾਹਰ ਵੀ ਅੰਦਰ ਐਂਟਰ ਹੋ ਜਵੇ ਸਾਡੇ ਹਿਰਦੇ 'ਚ ਕੁਝ ਗਲਤ ਚੀਜ਼ ਹੋ ਰੋਕੂ ਕੌਣ ਬਿਲਦਿਕੇ ਰੋਕੂ ਕੌਣ ਚਾਹੁੰਦਾ ਅਦੇ ਚਾਹੁੰਦਾ ਨਹੀਂ ਦੇਖਦਾ ਜੇਦੀ ਮੈਨੂੰ ਲੋੜ ਹੈ ਆਉਏ ਫਿਰ ਮੈਂ ਮਾੜੇ ਬਲਾਸਮ ਦੇ ਇਹੀ ਦੇਖਦਾ ਸ਼ਹਿਰ ਦੇ ਵਿੱਚ ਰਾਜਾ ਹੀ ਚਾਹੁੰਦਾ ਹੈ ਬੇਰੋਜ਼ਗਾਰ ਮਤਲਬ ਅ ਸ਼ਰਾਬ ਆਪਿੰਦਾ ਉਹਨੂੰ ਮਹਿਫਿਲ ਵਿੱਚ ਫਿਰ ਉਹ ਤਾਂ ਠਿਕਾ ਰੱਖੂਗਾ ਉਹ ਕਦੇ ਜਗਾਊਗਾ ਉਹ ਤਾਂ ਠਿੱਕਾ ਰੱਖੂਗਾ ਸਾਰੇ ਜਨ ਚੋਗਾ ਤੇ ਜਗਾਊਗਾ ਪੁਰਾਜਾਈ ਕੋਚਾਂ ਨਾ ਜਾਤੋ ਇਸ ਕਰਕੇ ਜਿਹੜਾ ਬੁੱਧ ਮਾਨਸੇ ਤੋਤੇ ਹਾਵੀਆਦੋਂ ਤੱਕ ਬੁੱਧੀ ਬਲੁਖੀ ਹੈ ਜਿੰਨਾ ਜਰ ਮਾਨ ਹਾਵੀ ਹੈ ਉਹਨਾਂ ਚਾਹਦਾ ਸੰਤੋਖੀ ਨਹੀਂ ਹੈ ਜਿੰਨਾ ਜਰ ਸੰਤੋਖੀ ਉਹਨਾਂ ਚ ਮਤਰਾ ਹਾਵੀ ਹੈ ਨਾ ਨਹੀਂ ਹੈ ਸੰਤੋਖੀ ਉਹਨਾਂ ਚ ਹਾਵੀ ਮਵਸੀ ਰਾਜਾ ਜਿੰਨਾ ਜਰ ਮਵਸੀ ਉਹਨਾਂ ਚ ਕਰਤੇ ਕਮਜਾਈ ਹੋਦਾ ਕਰਤੇ ਕਮਜਾਈ ਹੋਦਾ ਸਰਕਾਰ ਵゼਰਾ ਕੋਸ਼ਿਸ਼ ਕਰਦੀ ਹੈ ਪੁਲਿਸ ਦੀ ਨਸ਼ਿਆਂ ਨੇ ਹਰ ਦੇ ਨਕਸਰ ਫੇਰ ਨਹੀਂ ਹਰਦੇ ਮਿਲੇ ਕੁਛ ਕਰ ਚੋਰੀ ਦਾ ਜੋ ਵੀ ਕੁਛ ਕਰ ਨੂੰ ਇਹਨੇ ਸਰਕਾਰ ਚਲੀ ਜਾਂਦਾ ਅਜਨੇ ਨੂੰ ਸਮਝ ਆਈ ਐ ਤੇ ਬੁੱਧੀ ਮਨੇ ਹੁ ਮਨਾ ਰਹੀ ਐ ਕੇ ਹਾਂ ਜੇਪਰ ਸਾਹਿਬ ਕਹਿ ਕੇ ਜੇਪਰ ਸਾਹਿਬ ਹਾਂ ਹਾਂ ਠੀਕ ਹੈ ਤਾਂ ਇਹੀ ਐ ਪ੍ਰਸਾਦ ਦਾ ਅਰਥ ਦੇ ਵਿੱਚ ਗੱਲ ਕੀ ਐ ਉਹ ਕਿਰਪਾਸਾਹੀ ਹੋ ਰਹੀ ਐ ਪਤਾ ਆ ਸਵਾਲ ਉਹ ਅਸਰਕ ਮਾਨਾਰ ਰੂਤੀ ਤਾਂ ਮੰਨੇ ਅਨਾਚਤ ਅਰੂਤੀ ਮੰਨੇ ਨਾ ਉਹਦੀ ਗੱਲ ਉਹ ਤਾਂ ਅਚਤ ਰੂਤੀ ਮੰਨਿਆ ਤੋਂ ਨਹੀਂ ਨਹੀਂ ਉਹਨਾਂ ਦੇ ਆ ਵੀ ਹੁਣ ਛੱਡਣ ਨੂੰ ਚਾਹੀਦਾ ਆ ਵੀ ਛੱਡੋ ਪਰਿਆ ਛੱਡਣ ਚਾਹੀਦਾ ਫੇਰ ਕਿਤੇ ਮੰਨ ਕਰਨਾ ਆਇਆ ਤੁਹੇ ਇੱਕ ਨਾਇਬਿਆੰਦਸ ਹਾਂ ਉਹ ਦਾ ਜਮਾਨੇ ਖਲਾਬ ਜਾ ਰਹੀ ਬੁੱਧੀ ਟਾਈਮ ਬਣਾ ਕੇ ਉਹਦੀ ਫਿਰ ਉਹ ਜਾਂ ਚੁੱਪ ਕਰ ਜਾਂਦੀ ਕਰ ਦਿੰਦਾ ਉਹ ਦੋਵੇਂ ਲਮ ਜਾ ਗਿਆ ਤੁਸੀ ਨਾਲ ਸੀ ਐਗਰੀ ਹੋਇਆ ਉਹ ਵੀ ਫਿਰ ਹੌਲੀ ਦੇ ਕੇ ਜਾ ਜਾਂਦਾ ਬੁੱਧੀ ਦਾ ਵੀ ਚੱਲ ਕਰ ਲੈ ਆਂ ਫਿਰ ਦੇਖ ਲੈਂਦੇ ਉਹ ਵੀ ਕਹਿੰਦੀ ਐ ਨਾ ਸਰਦਕੀ ਗੱਲ ਜਦੋਂ ਨਾ ਇਹਦਾ ਮਦਦ ਕਰਦੀ ਐ ਨਾਲ ਹਾਂ ਬੁੱਧੀ ਜੇਤੀ ਮੰਨ ਜਾਂਦੀ ਐ ਜਦ ਬੁੱਧੀ ਰਹਿਣ ਲੱਗੀ ਮੰਨਣਾ ਹੀ ਨਹੀਂ ਹੁੰਦਾ ਫੇਰ ਬਬੇ ਬੁੱਧੀ ਛੱਡੀ ਐ ਮੇਰੇ ਤੋਂ ਚੁੱਪ ਕਰਦਾ ਕਰਦਾ ਵਾਅ ਇਹ ਤਾਂ ਤਾਂ ਕੰਮ ਐ ਮੰਨਦਾ ਇਹ ਦੂਆ ਫਿਰ ਦਿਖਾਣਾ ਪੈਂਦਾ ਰੂਪ ਆਪਣਾ ਪ੍ਰਚੰਡ ਰੂਪ ਦਿਖਾਏ ਬਨਾ ਫਿਰ ਕੋਈ ਬੋਲਦਾ ਜੀ ਇਹ ਇਹ ਖਿੱਚਦਾ ਇਹ ਟੋਬੇ ਜੀ ਖਿੱਚਦਾ ਹਾਂ ਮੈਨੂੰ ਇਹ ਸਮਝੀ ਆ ਵੀ ਕਿ ਉਹਦੀ ਕਿਰਪਾ ਦੀ ਵਜ੍ਹਾ ਸਾਰਾ ਕੁਝ ਹੈ ਸਮਝੀ ਆ ਹੁਣ ਨਹੀਂ ਹੋ ਰਹੀ ਜੀ ਹਾਂ ਉਹਨਾਂ ਦਾ ਮੰਨ ਲਿਆ ਵੀ ਗੱਲ ਠੀਕ ਹੈ ਇਹੀ ਹੈ ਤੂੰ ਬੁਰਕੋ ਸ਼ਬਦ ਨੇ ਲੈ ਲਿਆ ਲੱਗਦਾ ਹਾਂ ਹਾਂ ਇਹਨੂੰ ਸ਼ਬਦ ਲਿਓ ਕਹਿ ਨਹੀਂ ਬਦਲੀ ਇਹ ਜੀਵਾਹ ਦੱਸੋ ਜੋ ਸਮਝ ਹੋਣੀ ਹੈ ਸਭ ਤੋਂ ਪਹਿਲਾਂ ਅਕਲ ਹੋਣੀ 12ਵੀਂ ਅਕਲ ਨੇ ਸੁੱਕੇ ਹੋਣੇ ਅਕਲ ਦਾ ਨਵਾਸ ਤਾਂ ਥੱਲੇ ਚਿੱਤ ਨੇ ਤਾਂ ਸਮਝੀ ਗੱਲ ਮੰਨਣੀ ਹੈ ਗੱਲ ਤਾਂ ਠੀਕ ਹੈ ਗੱਲ ਠੀਕ ਹੈ ਗੱਲ ਤਾਂ ਠੀਕ ਹੈ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹਨੇ ਕਹਿੰਦਾ ਇਹ ਸਾਰਾ ਕੁਝ ਦਾ ਹੈ ਨਾ ਕੈਨ ਟ ਲੱਗਦਾ ਦੂ ਫੇਰ ਜੇ ਉਸ ਸਟੈਂਡ ਲੈ ਲਵੇ ਫੇਰ ਵੀ ਜੋ ਸਟੈਂਡ ਲੈ ਲਵੇ ਫੇਰ ਉਹ ਕੇ ਫੇਰ ਉਹ ਦਾ ਸਟੈਂਡ ਦਿੱਤੇ ਫੜਾ ਫੜੀ ਬੰਦੇ ਕੀਗਾ ਤਾਂ ਨਹੀਂ ਨਹੀਂ ਜੇ ਉਹ ਮੰਨਦੇ ਹਟੇ ਹੀ ਉੱਥੇ ਅੱਡੇ ਕੋ ਹੋ ਜਵੇ ਉਹਦਾ ਬੁੱਲਣਾ ਫਿਰ ਉਹ ਗਈ ਗਿਆ। ਉਹਦਾ ਫੇਦਾ ਫੋਟੋ ਆਣਦਾ ਫੇਦਾ ਪਲੀਤਾ ਜਾ ਲੱਗਿਆ। ਪੁਰਨ ਹੋਇ ਚਿੱਤ ਗਿਚਾ। ਉਹ ਦੇਲੇ ਆ ਪਲੀਤਾ ਅੱਗ ਆ ਰਹੀ ਹੈ। ਜਾਂ ਨੇੜੇ ਨਾ ਜਾਂਦਾ ਬਿਜਾਦਤ ਦਾ। ਬਸ ਹੋਰ ਦੀ ਕਰਦਾ। ਉਹ ਬੰਨੇ ਨੇ ਆਤਮਤਿਆ। ਕਰਦਾ ਦੀ ਮੰਤਰੀ ਤਸੱਲ ਸੀ। ਉਹ ਬੰਨਣਾ ਜਾਤੋਂ ਮਤੈ ਦੀ ਪਰ ਇੱਤੇ ਦੋ ਲੱਭ ਜਾਂਦਾ ਰਵੀ ਸ਼ੱਡ ਵਾਲੇ ਹੋਣ ਟਾਈਮ ਲਾਉਣ ਮੈਂ ਗ੍ਰਹਿ ਲਾਉਣਾ ਚਾਹੁੰਦਾ ਹਾਂ ਮੈਂ ਫਿਰ ਬੈਠਾ ਗ੍ਰਹਿ ਲਾਵੇ ਆਂ ਚੱਤੇ ਪੈਕਾਂ ਹੁੰਦਾ ਸੀ ਚਿੱਤੇ ਆ ਕਿੱਤੇ ਪੈਗਾਮ ਨਾਲ ਮਨੋਦਯਾ ਮਾਨ ਕਰਕੇ ਜਿੱਤ ਵੀ ਕਹਿਦਾ ਬੁੱਧੀ ਯਾਰ ਮਾਤਾ ਦੇ ਕਿ ਪਾਸੇ ਹੋ ਜਾਂਦੇ ਹੈ ਕੇ ਜਦ ਹੀ ਆ ਜਾਂਦੀ ਹੈ ਹਾਂ ਹਾਂ ਆਉਂਦੇ ਕਿ ਜਿਹੜੇ ਤਿੱਕੇ ਕਦੇ ਕੋਈ ਅੱਗੇ ਕਦੇ ਕੋਈ ਅੱਗੇ ਕਦੇ ਕੋਈ ਇਹ ਰਹਿਣਾ ਬਰਾਬਰ ਤੇ ਜਦ ਜਦ ਇਹ ਜਦ ਨੂੰ ਬੁੱਧੀ ਨੇ ਸਮਝਾਉਣਾ ਹੈ ਕਦੇ ਬੁੱਧੀ ਆ ਚਿੱਤ ਦੀ ਗੱਲ ਹੈ ਸੁਣਿਆ ਨਹੀਂ ਕਦੇ ਮਨ ਅਕੀ ਹੋ ਕੇ ਬੋਲਦਾ ਮੈਂ ਬਸ ਆਵੇ ਇਕੱਠੀਆਂ ਹੋਣੀਆਂ ਨੇ ਨਾ ਕਿੰਨੇ ਵਾਰਾਂ ਵਿੱਚ ਨਾ ਜਦੋਂ ਉਹ ਸਟਾਰਟ ਹੋਈ ਹੈ ਗੱਡੀ ਜਦੋਂ ਵੀ ਸੋਈਆਂ ਤੱਕ ਇਕੱਠੀਆਂ ਸੀ ਉਦੋਂ ਸਟਾਰਟ ਕੀਤਾ ਸੀ ਟਾਈਮ ਇੱਟ ਬਿਟਾਣੀ ਕਟਿਆਣੀ ਸੂਈ ਇਕੱਠੀ ਹੁੰਦੀ ਹੈ ਤੇ ਘੜੀ ਨੂੰ ਤੁਸੀਂ ਚਲਾਉਣਾ ਸਮਾਂ ਸ਼ੁਰੂ ਉੱਥੇ ਹੁੰਦਾ ਸਮਾਂ ਸ਼ੁਰੂ ਉੱਥੇ ਹੁੰਦਾ ਉੱਥੇ ਆ ਕੇ ਨੰਬਰ ਮਿਲਿਆ ਤੇ ਬਟਾਚੀ ਘਰੂਣੀ ਕਿ ਬੰਦ ਹੋਈ ਜਾ ਉਦੋਂ ਹੀ ਹੈ ਜਾ ਕੇ ਜਿਵੇਂ ਤਿਆਸੀ ਉਵੇਂ ਬਾਅਦ ਸੁਣਨਾ ਹੈ। ਕਹੀ ਡੇਟ ਬਦਲ 12 ਮਹੀਨੇ ਬਾਅਦ ਨਾ ਦੇ ਡੇਟ ਬਦਲਦੇ ਨੇ। ਇਹ ਮਤਲਬ ਹੈ। ਕੱਠਾ ਜਿਹੜਾ ਹੈ। ਇੱਕ ਹੋਇਆ ਨਿਕਲਦਾ। ਨਿਕਲਦਾ। ਇੱਕ ਹੋਇਆ ਨਿਕਲਦਾ ਤਾਂ ਵਾਪਸ ਆਦਾ ਚੋ ਬਾਅਦ। ਜਿੰਨੇ ਸਮਾਏ ਗਈ ਇੱਕ ਜਨਾ ਜਰ ਹੁੰਦਾ ਨਹੀਂ ਵਾਪਸ ਆਦੋਂ ਤੋਂ ਬਾਅਦ। ਜੇ ਇੱਕ ਤੋਂ ਪਹਿਲਾਂ ਜਾਣਦਾ ਭਾਬ ਸਾਗਰ ਜਿਉਂ ਮਰਦਾ ਰਹਿਣਾ ਭਾਬ ਸਾਗਰ ਦੇ ਹਜ਼ਰੀਏ ਅਦਰਸ਼ੁੱਤ ਰਹਿਣਾ ਅਦਰਈਆ ਰੂਪ ਉਹ ਤਾਂ ਇੱਕੋ ਪਰ ਆੜ-ਆੜੇ ਪਰਮ ਦਾ ਅਟਾ ਹੁੰਦਾ ਪਰਮ ਦੀ ਵੀ ਰੂਹੀ ਉਹਨਾਂ ਦੇ ਪਰਮ ਦੀ ਵੀ ਰੂਹੀ ਉਹ ਸਰਵ ਵਿਆਪੀ ਹੋ ਜਾਂਦੇ ਨੇ ਬੌਡਰ ਇਹ ਇਹ ਇਹ ਆਲੇ-ਦਾਲੇ ਬੌਡਰ ਹੀ ਹੁੰਦੀ ਵਿਚ ਜੋਤ ਆਉਂਦਾਂ ਲਈ ਕਾਲ ਹੈ ਹਾਂ ਰਾਇਦਾ ਉਹਦੇ ਕਾਲ ਚ ਉਹਦੇ ਆਉਂਦੇ ਆਲੇ ਕਾਲ ਸੈ ਜਿੱਥੇ ਕਾਲ ਸੈ ਨਹੀਂ ਉਹਦਾ ਵਿੱਚ ਇੱਟੇ ਜੋਗੇ ਸਾਰੇ ਇਹ ਆਡਾ ਡਰ ਹੈ ਉਹਦੇ ਵਿੱਚ ਵੱਖਰਾ ਅੰਡਾ ਦਾ ਵਿजूद ਵੱਖਰਾ ਹੈ ਉਹ ਜਿਹੜਾ ਅੰਡਾ ਹੈ ਜਿਹੜੇ ਅੰਡਾ ਨਾ ਉਹਨਾਂ ਜਿਹੜਾ ਅੰਡਾ ਇਹਨੂੰ ਅੰਡਾ ਕਹਿੰਦੇ ਜੋ ਬ੍ਰਹਮ ਅੰਡੇ ਸੋਈ ਹੁੰਦੇ ਹੁਣ ਉਹ ਸਰੀਰ ਵਿੱਚ ਆ ਤੋੜ ਕੇ ਆਂਡਾ ਦੋ ਤੋਂ ਕੀਤਾ ਹੈ। ਜੋ ਖੋਜੇ ਸੋ ਪਾਵੇ। ਕੋਈ ਜਣਾ ਕੀ ਪਉ ਪਹਿਲਾਂ ਤਾਂ ਬੰਦ ਕੋਚਣਾ ਬਹੁਤ ਤਾਂ ਜੋ ਫਿਰ ਮਨ ਵਿੱਚ ਉਹਨੂੰ ਖੋਜਣਾ ਪਉ। ਤਾਂ ਅਗਲੇ ਦਾ ਸੇਖੀ ਪ੍ਰਾਪਤੀ ਹੋ। ਕਿਹ ਹੋਇਆ ਇਹ ਆਪ ਨੂੰ ਪਤਾ ਹੀ ਹੈ ਪਹਿਲਾਂ ਤੁਨ ਵਿੱਚੋਂ ਮਨ ਖੋਜਣਾ ਤੇ ਸੁਭਨ ਕੋਈ ਕੋਈ ਖੋਜੋ ਭਾਈ ਫਿਰ ਮਨ ਦੇ ਵਿੱਚੋਂ ਜਾਤ ਮੇ ਜੋਤ ਜੋਤ ਮੇ ਜਾਤਾਂ ਜੋਤ ਦੇ ਵਿੱਚ ਹੋ ਜਾਣੀ ਜਿੱਤੀ ਜੋਤ ਹੈ ਜੋਤ ਦੇ ਵਿੱਚੋਂ ਜਾਣਿਆ ਚਾਹੀਦਾ ਸੂਰ ਜਿੱਤੀ ਜੋਤ ਹੈ ਤੋਂਪਾ ਤੋਂਪ ਕੀ ਨਹੀਂ ਜੋਤ ਹੈ ਵਿੱਚ ਤੋਂਪ ਜਿ ਖੜ ਕੇ ਦੇਖਾਂਗੇ ਕਿਥੇ ਤੋਂਪ ਕਿਥੋਂ ਆ ਰਹੀ ਹੈ ਸਹੀ ਪਤਾ ਲੱਗੂਗਾ ਤੋ ਫਿਰ ਬਿਚਲ ਕੋ ਜੂ ਨਾ ਮੰਤੂ ਜੋਤ ਨੂੰ ਕਹਿਆ ਤਾਂ ਜਾਤ ਵਿੱਚ ਜੀ ਜੋਤਾ ਹੋਣੇ ਆ ਆਹ ਬਨੇ ਰਚਨਾ ਹਰੇ ਯੋਦੇ ਜੀ ਮਨੇ ਜਿਹੜੀ ਜਾਤ ਹਾਂ ਜੇ ਅਗਿਆਤ ਸੇ ਸਦਾ ਹਜ਼ੂਰੇ ਹਾਂ ਤੂੰ ਸਮਝ ਵੀ ਤੇਰੇ ਨਾਲ ਹਰ ਵਕਤ ਇਹ ਜਾਣ ਲੈ ਤੂੰ ਇਹ ਹਕੀਕਤ ਹੈ ਤੈਨੂੰ ਦੀਣਾ ਚੋਗ ਦਾ ਲੱਗਦਾ ਤੇਰੇ ਕੋ ਖੰਗ ਆਇਆ ਦੇਖਣ ਆ ਰਿਹਾ ਨੇ ਉਹ ਅੱਖ ਨਹੀਂ ਹੈ ਤੇਰੇ ਕੋ ਦੇਖਣ ਲਈ ਜਿਹੜੇ ਕੋ ਖਬਰ ਮੂਸੀ ਦੇ ਉਹ ਅੰਦਰ ਹੈ ਸਾਰੇ ਜੂਰੇ ਹੁੰਦੇ ਨੇ ਉਹ ਅੰਦਰ ਹੈ ਬਾਹਰ ਦੀ ਅੱਖ ਹੈ ਤੇਰੇ ਕੋ ਮਾਇਆ ਦੇ ਕਰਨ ਲਈ ਇਹ ਮੰਨ ਲੈ ਬੁੱਧ ਦੇਖਦਾ ਦੇਵ ਜਿਹੜੇ ਅੰਦਰ ਹੈ ਜੂਵੇ ਦੀ ਗੱਲ ਵੀ ਤਾਂ ਉਹ ਨਾ ਮੰਨ ਲੈਂਦਾ ਹੁੰਦਾ ਜੇ ਜੂਵੇ ਦੀ ਗੱਲ ਨਾ ਮੰਨ ਲਵੇ ਤਾਂ ਉਹ ਠੀਕ ਰਹਿੰਦਾ ਜੋ ਕਾਹ ਨਾਲ ਹੀ ਹੈ ਫਿਰ ਟੋਕੇ ਦੇਖ ਜਿੰਨਾ ਚਿਰ ਉਹ ਨਾਲ ਹੈ ਕਿ ਚੜਦਾ ਹੀ ਹੈ ਇਹ ਵੀ ਹੋਊਗਾ ਦਾ ਪਛੇਣ ਨਹੀਂ ਕਦੇ ਜੀ ਕਿ ਜਿੰਨਾ ਚਿਰ ਉਹਦੀ ਕਰਮਾਂ ਨੇ ਹੁੰਦੀ ਕੰਮ ਕੁਝ ਚੜਦਾ ਹੀ ਠੀਕ ਹੈ ਜੇਪੁਰ ਸਾਹ ਕਾਰਜ ਪੂਰੇ ਕਿਸੇ ਜਨਮ ਨਾਲ ਸਰਾਜੂਗੇ ਜੋ ਦਿਨ ਘਰੇ ਵਿੱਚ ਜਿਹੜੇ ਵੀ ਕਾਰਜ ਆਪਰੇ ਅੱਜ ਤੱਕ ਸਿਰੇ ਚੜੇ ਨੇ ਪੂਰੇ ਹੋਏ ਨੇ ਉਹ ਦੀ ਗੱਲ ਹੋ ਰਹੀ ਹੈ। ਉਹਦੀ ਕਿਰਪਾ ਨਾਲ ਹੋਇਆ ਤੇ ਉਹਦੀ ਕਿਰਪਾ। ਪਹਿਲਾਂ ਤਾਂ ਦੇਖੋ ਨਾ ਉਹ ਪਿੱਛੇ ਇੱਥੇ ਤੱਕ ਗੱਡੀ ਉਹ ਲੈ ਕੇ ਆਇਆ ਉਹਦਾ जिने उनु पाले है बाप होवे भाई होवे कोई भी होवे उडे कैणज रहे ए कैणज रहन बदले यो नु सोगियां सुतौ दे देवे गुड़िया भरती हो ते उणा नु की महंगा भाई उणों जो चाहिदा बिना कुछ कर रहे ते उ मिल जावे तो उण कैण ता कैणे ਉਹ ਜੁੜੀ ਗੱਲ ਠੀਕ ਹੈ ਕਿ ਪਿਛਲੇ ਵੀ ਉਸੀ ਪ੍ਰੋਬਲਮ ਮੇਂ ਸੀ ਉੱਤੇ ਪਾਣੀ ਦੇ ਸੀਗਾ ਹਾਂ ਬੱਚੇ ਨੂੰ ਕੋਈ ਡੇਟਿਚ ਕਿਉਂ ਨਾ ਹੋ ਰਹੀ ਉਹਦੇ ਲਈ ਲੋੜਾ ਕੋਈ ਖਤਰਾ ਨਾਲੇ ਖਾਈ ਹੁੰਦੀ ਹੈ ਜੇ ਦੱਤੇ ਤੇ ਜਾਂ ਹੈ 'ਚ ਵੀ ਸੀਗਾ ਮਨ ਉਹਨਾਂ ਦੁਨੀਆ 'ਚ ਵੀ ਸੀਗਾ ਪਰ ਉਹਦੇ ਚਾਦਾ 37 ਰੱਖਦੇ। ਲੋਹਾ ਮੁਹੱਸੀ ਨਹੀਂ ਸੀ ਕਹਿਆ ਲੱਗਦਾ ਭਾਜੀ ਪਿਛਲੇ ਜੁਨਾਦਾਂ ਤੋਂ ਮਨ ਨੂੰ ਕਦੇ ਅਸਰ ਇੱਥੇ ਤਾਂ ਦਿਮਾਗ ਇਹਦਾ ਤਾਂਹਰਾ ਹੋ ਗਿਆ ਨਾ ਆਪਣੇ ਰਾਜਾ ਬੁੱਧਾ ਬਣੇ ਥੱਲੇ ਦੇ ਸਾਰੇ ਜੀਵ ਡਰ ਗਏਦਾ ਹੈ ਜੀ ਸਾਰੇ ਕਾਬੂ ਕਰ ਲਏ ਨੇ। ਹੁਣ ਤਾਂ ਆਦਮੀ ਆਦਮੀ ਕਾਬੂ ਕਰਦੇ ਨੇ। ਬਾਕੀ ਜੁਨਾਦਾਂ ਦਾ ਛੱਡੋ। ਜੇ ਛਾਹ ਰੱਬ ਆਪਾ ਬੋਲ ਗਿਆ ਇਹਨਾਂ ਨੂੰ ਖਾ ਦੇ ਦੀ ਬੁੱਝੇ ਪੂਜਾ ਅਪੜੀ ਕਰਾ ਦੇ ਰੱਬ ਨੂੰ ਕਈ ਬੁੱਝਦੀ ਨਹੀਂ ਉਤਾਈ ਨਹੀਂ ਅਸੀਂ ਉਹਨਾਂ ਤੋਂ ਪੁੱਛਾ ਗਾਥਲੇ ਬੇਬੇ ਕੋਈ ਨਾ ਇਨਾ ਕੁਝ ਦਿੱਤਾ ਕੀ ਨਹੀਂ ਦਿੱਤਾ ਵੀ ਦਿੱਤਾ ਬਾਕੀ ਜੀਵਨ ਨੇ ਕਦੇ ਕੋ ਮਦਦ ਨਹੀਂ ਉਹ ਬਾਰਾ ਦੇਖੀ ਕੀ ਹੋਣਾ ਦੀ ਹੋਵੇ ਕਿ ਕਰਦੇ ਆ ਦੇ ਬਾਰਸੀ ਹੋਇਆ ਸਹੀ ਹੋਇਆ ਉਹ ਪਹਿਲਾਂ ਪਾਣੇ ਦੇ ਬਾਹਰ ਦੇਖੋ ਅਸਲੇ ਵਿੱਚ ਪਹਿਲਾ ਇਹ ਲੇਟਰ ਨੋਲੇਜ ਵੀ ਹੈ ਜੀ ਬੁਖਾ ਜਨਕ ਤੇ ਪਹਿਲੋਂ ਇਹ ਲਿਟਲ ਨੋਮੀ ਕੱਟਾ ਹੈ ਇਸ ਕਰਕੇ ਉਹ ਡੇਂਜਰਸ ਵੀ ਹੈ ਆਏ ਨੇ ਇਹ ਲਿਟਲ ਨਾਲ ਜਨਾ ਆਦਮੀ ਆਲੀ ਜਾਨਵਰਾਂ ਨੂੰ ਪੜਾ ਲੈਣਾ ਜਾਨਵਰਾਂ ਨੂੰ ਆਪਣੀ ਬੋਲੀ ਸਿਖਾ ਲੈਣਾ ਕਿਸੇ ਨੂੰ ਤੰਨਾ ਬਣਾ ਕੇ ਜੋੜ ਲਿਆ ਕਿਸੇ ਨੂੰ ਘੋੜਾ ਬਣਾ ਕੇ ਜੋੜ ਲਿਆ ਹਸਲੋ ਕੁਸਤਰਾ ਲਿਆ ਫਿਰ ਨਸ ਪਾਲੀ ਇਹਦੇ ਨਸ ਇਹ ਜਿਹੜੀ ਆ ਨਾ ਇਹ ਤੋਂ ਟੱਕਦੀ ਇੱਕ ਇਹਨਾਂ ਵਾਲੇ ਨੇ ਕਹਾ ਰੱਬ ਬਹਿਉ ਉਹਨੇ ਹਾਥੀ ਬੜਾ ਦਾ ਮੈਂ ਬਸ ਕਰ ਲਿਆ ਹਜ਼ਰੋਂ ਕੱਤਾਂ ਉਹ ਕਹਿੰਦੇ ਰੱਬ ਦਾ ਤਾਂ ਰੱਬ ਦਾ ਸਭਾ ਕਿਹਾ ਰੱਬਾਂ ਦੇ ਬੁਰਾ ਦੋਸਤ ਨਹੀਂ ਹਸੀ ਸ਼ੇਰਨ ਬਿਜੇਸ਼ ਪਾਲਿਆ ਸ਼ੇਰ ਬਿਜੇਸ਼ ਪਾਲਿਆ ਬਿੱਤੋੜ ਦਾ ਜੋ ਜਾਨਵਰ ਹੈ ਜੋ ਚੀਜ਼ ਜਾਨ ਨੇ ਸਾਜਦੀ ਹੈ ਸਭ ਕੁਝ ਗਲਪੇ ਬਿਜੇਸ਼ ਜੇ ਜੇ ਮਨਾਂ ਬਹਿਵਰਾ ਪਾ ਤੇਰੇ ਹੋ ਕੋਈ ਹੋ ਗਿਆ ਰੱਬ ਦਾ ਹੋਰ ਕੋਈ ਰੱਬ ਦਾ ਹੋਰ ਕੋਈ ਹੋ ਸਕਦਾ ਰੱਬ ਕਹਿਆ ਬਸ ਤੇ ਮਕਾਨ ਤਾਂ ਹੀ ਗੂਸੇ ਮਾਜੀਏ ਸਾਹੀ ਬੋਲ ਰਹਾ ਮਾਜੀਏ ਇਹਨਾਂ ਨੂੰ ਵਿਚਾਲੋ ਅਪਪੀ ਦੇ ਦਾ ਕੋ ਬੇ ਲੋ ਪਈ ਨੰ ਵੀ ਦੇ ਜੀ ਜੋ ਕੋਈ ਦਾਣਾ ਰாகு ਮੰਨਣਾ ਤਾਂ ਉਹ ਜਨਤਾ ਦਾ ਕਿ ਜਨਤਾਂ ਦਾ ਮੁਰਗੀ ਇਹ ਸਾਰੇ ਜੀ ਆ ਉਹ ਥੋੜੇ ਜਿਹੇ ਬੰਦੇ ਜਿਹੜੇ ਉਹਦੀ ਮਗਰੇ ਹੁੰਦੇ ਨੇ ਚੱਕੀ ਭੇਡਾ ਕੇ ਪਾਛੇ ਚੱਲ ਅਬ ਬੜ ਬਾਗਸੋਂ ਜਾਣ ਗਿਆ ਇਥੋਂ ਦੱਸ ਦੱਸ ਕਿ ਕੇ ਆਪਣੇ ਪੁੱਤ ਚੜ੍ਹ ਜਾ ਕੇ ਉਹ ਉਹ ਤਾਂ ਨਾ ਕੋ ਨਾ ਕੋ ਲੈਣ ਨਾ ਕੋ ਦੇਣ ਉਹ ਲੋਕ ਨੇ ਉਹਨਾਂ ਦੇ ਬੰਦੇ ਰੱਖੇ ਨੇ ਫੂ ਫੂ ਕਰਦੇ ਉਹਨਾਂ ਦੀਆਂ ਨੇ ਉਹਨਾਂ ਦੀ ਇਹ ਨਾ ਪਹਿਤਨ ਤੇ ਨਾ ਬਿਲਕੁਲ ਨਾ ਚੁੱਕੇ ਗਿਆ ਇਹ ਤਾਂ ਇਸ ਬੌਡੀ ਤੇ ਜੇ ਲੜ ਚੁੱਕੇ ਕੱਟਨੇ ਹਯੋ ਨਹੀਂ ਨਹੀਂ ਨਹੀਂ ਕਿਉਂਕਿ ਉਹ ਕਹਿੰਦੇ ਐ ਨਹੀਂ ਆਪਣੀ ਫੌਲੀ ਸੇਵ ਜਾਂਦਾ ਆ ਪੁੱਛੇ ਹਾਂ ਹਯੋ ਨਹੀਂ ਜਾਂ ਸੇ ਨਹੀਂ ਹੈ ਇੱਥੇ ਹੀ ਦੇਖੋ ਹੋਰ ਪੌੜੀ ਤੇ ਕਿਸੇ ਧਰਮ ਬਣਾਇਆ ਧਰਮ ਬਣਾਇਆ ਆਪਣੀ ਮਰਜ਼ੀ ਦਾ ਇੱਥੇ ਆਕੇ ਹੀ ਇਹਦਾ ਦਿਮਾਗ ਕੰਮ ਜੈਸਾ ਰੁਪੇਤੀ ਹੋਰ ਪੁਤੀ ਦੁਨੀਆਂ ਤੇ ਕਬਜ਼ਾ ਕਰਦਾ ਇੱਥੇ ਹੀ ਆਕੇ ਕੰਮ ਲੱਗੇਆ ਉਹ ਨਾਲ ਨਾ ਦੱਸਦੇ ਸੌਫੀ ਤੇ ਕਿਡੇ ਕੁੜੇ ਰਬ ਜਲੇ ਕਰ ਲੰਦੇ ਨੇ ਉਹ ਜਾਂ ਉਸ ਸੌਫੀ ਕਰਦਾ ਛੇੜ ਲਾ ਮਾਲ ਨਾਲ ਗੋਦਨ ਬਾਦ ਮਾਸ ਨੇ ਦੂਰੇ ਬਦਬੂ ਛੱਡ ਜਾਂਦੇ ਫਿਰ ਖਾਦੀ ਕਰਦਾ ਜਿੰਨੋ ਰੱਜ ਕੇ ਇੱਕ ਵਾਰ ਖਾ ਲਿਆ ਤਾਂ ਜ਼ਰੂਰ ਭੁੱਖਾ ਨਹੀਂ ਲੱਗਦੀ ਸਿਰ ਦਿਨਵਾਦੋਂ ਖਾਣ ਹੋਰੇ ਨਹੀਂ ਆਦਾ ਉਹ ਵੀ ਪਰੇ ਚ ਰਹਿਣਦਾ ਵੀ ਚੱਲ ਹੋਰ ਖਾ ਲੈਣਗੇ ਜਾਨਵਰ ਉਹਨੋ ਦਬੜੀ ਕਰਨਾ ਹਮ ਨੂੰ ਬੁਖਾਈ ਦੀ ਉਹ ਆਪਣਾ ਕਦੇ ਖਾੜੇ ਜਿ ਵੜ ਕੇ ਆਪਣਾ ਆਰਾਮ ਕਰਦੇ ਸੌ ਜਾਂਦਾ ਉਰੂ ਵੀ ਤਾਂ ਕਾਂ ਡਾਰਾ ਹੈ ਯਾਰ ਉਰੂ ਵੀ ਹੈ ਸਿਸਟਮ ਹੈ ਕਰਦਾ ਰਹੇ ਉਹਨੇ ਖੱਲਾਂ ਸਾਥ ਪਿਛਾ ਦੇਉਂਦੇ ਬੈੰਦੇ ਰਹੇ ਕਈ ਲਖ ਦੀ ਗੁਰੂ ਇਹ ਗੱਲ ਹੁਣ ਦੀ ਸ਼ੇਰ ਦੀ ਆ ਸਿੱਧੇ ਨੇ ਰੋਣੂ ਭਗਦੇ ਹੂੰ ਕੀੜੇ ਇਕੱਠੇ ਛੋਟੇ ਛੋਟੇ ਜਾਨੇ ਕੱਟੇ ਨੂੰ ਰੋਟੀ ਕੇ ਜਦ ਦਬਦੰਦਾ ਕਰ ਉਹ ਕੋ ਬਾਤ ਕਰਦਾ ਉਹ ਚਲ ਇੰਨਾ ਸ਼ੌਕ ਦੀ ਕਰਦੇ ਕੁਝ ਕਰਦੇ ਨਾ ਥੋੜਾ ਜਿਹਾ ਸਵੇਰ ਕੁੱਤੇ ਦਾ ਸਵੇਰ ਚਾਹੀਏ ਹੈ ਆਦਮੀ ਨਾਲ ਜੋੜਿਆ ਹੋਇਆ ਐਵੇਂ ਚੀਂਟੀ ਦਾ ਸੁਭਾਅ ਵੀ ਆਦਮੀ ਨਾਲ ਜੋੜਿਆ ਹੈ ਸਾਇਕਬੀਰ ਗੁਰਪ ਪਰਿਵਿਚਾਈ ਚੀਟੀ ਬਣ ਕੇ ਆਇਆ ਚੀਟੀ ਵਾਸੀ ਆਇਆ ਰਾਤ ਨੂੰ ਛੋਟਾ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸੋ ਰਾਜ ਜੇ ਪ੍ਰਸਾਦ ਤੂੰ ਪਾਵੇਂ ਸਾਚ ਜਿਹਦੇ ਪ੍ਰਸਾਦ ਕਿਰਪਾ ਨਾਲ ਤੂੰ ਸਾਚ ਪ੍ਰਾਪਤ ਹੋਵੇ ਕਿਉਂਕਿ ਇਹ ਕੂੜਿਆ ਰਹਿ ਸੱਚ ਹੈ ਉਹ ਸੱਚ ਆ ਰਹਾ ਹੈ ਉਹਦੇ ਕੋਲ ਸੱਚ ਮਿਲਣਾ ਹੈ ਆਹ ਗਾਉਂਦਾ ਇਹਦਾ ਵੀ ਹੈ ਪਾਵੇਂ ਇਹ ਹੁਣ ਰੱਬ ਕੰਮ ਨੂੰ ਬਾਕੀ ਰਹਿਦਾ ਉਹ ਆਇਆ ਉਹ ਸੱਚੀ ਪ੍ਰਾਪਤ ਉਹ ਤਾਂ ਸਾਡੇ ਪਹਿਲੇ ਤੋਂ ਪੂਰੇ ਉਹ ਤੋਂ ਸਾਥੀ ਜੀ ਤੋਂ ਮਿਲਣਾ ਨਾ ਇੱਕ ਮਤਲਬ ਉਹਨਾਂ ਤੋਂ ਰਛੇ ਨਾਲੇ ਹੁਣ ਹਾਂ ਉਹਦੇ ਉਹਨਾਂ ਨਾਲੇ ਹੁਣ ਅਸਲ ਚ ਭਗਤੀ ਹੀ ਮਨ ਤੇ ਬੰਨੇ ਤੇ ਬਾਤ ਸ਼ੁਰੂ ਹੁੰਦੀ ਹੈ ਅਸੀਂ ਭਗਤੀ ਹੋਣੀ ਹੈ ਉਹ ਇੱਥੋਂ ਦਾ ਸ਼ੁਰੂ ਹੋਣੀ ਹੈ ਜੋ ਮਨ ਤੇ ਮਹਾਂ ਤੋਂ ਬਾਤ ਸ਼ੁਰੂ ਹੁੰਦੀ ਹੈ ਭਗਤੀ ਮਨ ਨੂੰ ਨਾਉਣਾ ਭਗਤੀ ਨਹੀਂ ਹੈ ਭਗਤੀ ਕਰਵਾਤੇ ਬਣਾ ਰਹੀ ਹੈ ਮੇਰਾ ਮਾਣ ਨਹੀਂ ਮੰਨਦਾ ਭਗਤੀ ਕਰੂ ਉਹ ਜੇ ਮਨ ਮੰਨੇ ਜੇ ਭਗਤੀ ਕਰੂ ਕੀ ਉਹ ਭਗਤੀ ਹੋਗੀ ਸਕੂਲ ਜਾਣਾ ਮਨ ਨਹੀਂ ਬੋਲਦਾ ਸਕੂਲ ਜਾਣ ਨੂੰ ਮਨ ਮੰਨ ਗਿਆ ਤਾਂ ਉਹ ਲਾਇਲਲ ਵੀ ਕਰ ਗਿਆ ਫਿਰ ਫਿਰ ਉਹ ਸੰਤ ਕੋ ਗਿਆ ਮੈਂ ਤਾਂ ਦੇਖਿਆ ਜਾਂਦੇ ਮਾਲਾ ਦੇਤੀ ਬਣਾਤਾ ਭਾਗਤ ਨੰਨੇ ਲਾਸਤ ਮੋਹਰ ਖੜ ਦੇ ਬਾਲ ਅਸਤਾਜ ਨੰਨੇਗਾ ਲੋਕ ਦੇਖਣ ਬੜਾ ਬਲਤ ਆ ਆਇਆ ਰਹਿਣਾ ਸੀ ਕੋਲ ਸਾਰੇ ਇਹ ਤਾਂ ਲੱਗਿਆ ਹੋਇਆ ਇਹਨਾਂ ਦਾ ਸਾਰੇ ਸੰਸਾ ਦਾ ਸਾਡੀ ਵੈਲਿਊ ਕੁਝ ਨਹੀਂ ਰਹਿਣੀ ਇਹਨਾਂ ਦਾ ਫ੍ਰੀ ਦਾ ਚੱਲਦਾ ਠੱਗ ਐਵੇਂ ਉਹ ਕਹਿੰਦਾ ਜਿਦਾ ਕਿਹਾ ਸੀ ਨਾ ਬੁੱਧੂ ਦਾ ਆਵਾ ਉਹ ਬੁੱਧੂ ਨਾ ਕੋਈ ਬੁੱਧੂ ਦੀ ਨਾ ਕੋਈ ਆਵਾ ਦਾ ਬੁੱਧੂ ਆਵਾ ਬਿਲਕੁਲ ਪੱਕਾ ਨਹੀਂ ਬਾਅਦ ਅੱਛਾ ਉਹ ਮੈਂ ਕਿਤੇ ਕਹਤੋਂ ਨਹੀਂ ਸੀ ਉਹ ਕਹਿੰਦਾ ਵੀ ਬੈ ਤੂੰ ਇਹ ਗੱਲਾਂ ਕਿੱਥੇ ਲਓ ਉਹ ਗੱਲਾਂ ਬਾਤਾਂ ਮੈਂ ਜਦੋਂ ਡੇਂਸ ਕਰਦਾ ਜਾਂਦੇ ਹੁੰਦੇ ਹਾਂ ਸੰਤ ਪੜ ਗੁਮਾਰ ਮੈਂ ਉਹ ਮੇਰਾ ਨੋਲੈਂਡ ਦਾ ਉਹ ਅਸਲ ਤਾਂ ਉੱਥੇ ਅਸੀਂ ਰਹੇ ਹਾਂ ਸਾਡੇ ਨਾਲ ਬਚਦੇ ਸੀਗੇ ਸੰਤ ਤੋਗੀ ਉਹ ਉਹਦੀ ਬੜੀ ਇੱਜ਼ਤ ਸੀ ਅਨਪੜ ਟੋਟਲ ਕਰੋ ਤੇ ਤਾਂ ਉਸ ਬੰਦੇ ਪਰਾਪੜੂ ਦਾ ਸਵਾਲ ਆਉਂਦਾ ਜੇ ਹੁਣ ਕੋ ਲਿਆ ਕਰ 2000 ਗੱਲਾਂ ਨਹੀਂ ਆਉਂਦੇ ਰੋ 5-7 ਗੱਲ ਉਹਨਾਂ ਵਾਲੇ ਲੋਕਾਂ ਦੇ ਨਾਲ ਹੁੰਦਾ 2 ਦਿਨ ਕੱਢਾ ਕਰਦੀਏ ਕਿ ਜੇ ਦੋ ਦੋ ਗੱਲਾਂ ਰੋਜ਼ ਕਰਦੇ ਚੱਲ ਛੱਜਣ ਤਾਂ ਨਾ ਪਤਾ ਨਹੀਂ ਉਹ ਕਿਹਾ ਗਿਆ ਦੀ ਜੇ ਪ੍ਰਸਾਦ ਸਭ ਦੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਇ ਜੇ ਪ੍ਰਸਾਦ ਸਭ ਕੀ ਗਤ ਹੋਈ ਸਾਰਿਆਂ ਦੀ ਰਤੀ ਕੇ ਮਨ ਹੋ ਗਈ ਕੀ ਇਹੋ ਜਿਹੜਾ ਜੀਵਨ ਸਾਰਾ ਦੀ ਉਹ ਇੱਕ ਜਾਪ ਹੈ ਇੱਕ ਐਸਾ ਜਾਪ ਹੈ ਜਪੜਾਣੀ ਕੈਸੀ ਚੀਜ਼ ਹੈ ਪੰਜਾਬ ਜਪੇ ਜਪ ਸੋਏ ਇੱਕ ਸਮਝਣ ਵਾਲਾ ਐਸਾ ਸ਼ਬਦ ਹੈ ਐਸਾ ਉਪਦੇਸ਼ ਹੈ ਐਸਾ ਗ੍ਰੰਥ ਹੈ ਜੇ ਪ੍ਰਸਾਦ ਸਭ ਕੀ ਗਤ ਹੋਏ ਹਰ ਇੱਕ ਕੋਈ ਚੱਲੂ ਕੋਈ ਕਿੱਦਾਂ ਹੀ ਫਸਿਆ ਹੋਵੇ ਬਧੀ ਕੋਈ ਕੋਈ ਤਰਮ ਹੋਵੇ ਪਰ ਟੇਕਾ ਕੋਈ ਜਾਂ ਤਾਂ ਕੋਈ ਚਿਲਾ ਕੇ ਦਿਖਾਵੇ ਸਭ ਦੀ ਗਤੀ ਕਰਕੇ ਦਿਖਾਵੇ ਇਹ ਚਾਰ ਹੋੜ ਵੀ ਪਿਠਾੜ ਲਾਂਗੇ ਅੰਨ ਲਗਾ ਲਾ ਮੈਂ ਗਤੀ ਕਰਉਣੇ ਉਹ ਤੇ ਚਾਰ ਹੋੜ ਪਿਠਾੜੇ ਥਾਂ ਵਿੱਚ ਪਿਠਾੜੇ ਪਈ ਇਹਦੀ ਗਤੀ ਇਹਦੇ ਆਰਾਮ ਜਿਆਦਾ ਮੈਂ ਚਾਹਦਾ ਇਹਦੀ ਗਤੀ ਤੇ ਫਿਰ ਗਤੀ ਹੋੜੀ ਕਿਤੋਂ ਮੰਨੇ ਕੀ ਗੱਤ ਕਹੀ ਨਾ ਜਾਏਗਾ ਨਾ ਜਿੰਨਾ ਗੱਦੀ ਤੋਂ ਵੀ ਹੋ ਜਣੀ ਐ ਦਾ ਸਮਝਾਂ ਨੂੰ ਬੈ ਜਾਣੀ ਐ ਸਮਝਾਂ ਨੂੰ ਬੈ ਜਾਣੀ ਨਵੀਂ ਤਾਂ ਬੈ ਜਿਨੇ ਜਿੱਥੇ ਖੜਾ ਉਥੋਂ ਕੇ ਚੱਲ ਦੋ ਹੋਵੇ ਦੋਵਾਂ ਚਾਰ ਬਣਤੇ ਛੇ ਇਹ ਤਾਂ ਵਰੀ ਜਾਣੇ ਇਹ ਤਾਂ ਇਹ ਤਾਂ ਸਾਰੇ ਗੱਲ ਪੈ ਜਾਣੇ ਨੇ ਕਿਹੜੀ ਦਾ ਬਾਝੋਂਗੇ ਇੱਕ ਗੱਲ ਮੰਨ ਲਓ ਉਹ ਕੇ ਸੰਤ ਕਹਿੰਦੇ ਹੁੰਦੇ ਸਾਰੇ ਭਈ ਇੱਕ ਚੀਜ਼ ਛੱਡ ਦੇ ਬਸ ਚਾਹੋਗੇ ਤਾਂ ਨਾ ਵਿਚੂੜਾਂ ਹੋ ਗੋ ਉਹ ਜੋ ਮਰਜ਼ੀ ਕਰੀ ਜਾ ਚੋੜਨਾ ਹੋਣੀ ਉਗਲਾ ਠੀਕ ਲਾਏਗਾ ਇਹੋ ਬੂਲੀ ਗੱਲ ਹੈ ਚੋੜੀ ਲਾ ਹੋਦਾ ਭਾਵੇਂ ਜੋ ਮਰਜ਼ੀ ਕਰੀ ਤੇ ਚੋੜੀ ਦਾ ਦਾ ਨਿਹੋ ਚੋਰੀ ਤੇ ਬਿਲ ਗਿਆ ਨਾ ਰਈ ਚੋੜੀ ਗੱਲ ਹੀ ਚੋੜੀ ਕਾਲਾ ਗਿਆ ਜਦ ਕਹਨਾ ਜੇਕਰ ਨੇ ਮੈਨੂੰ ਕਿਹਾ ਵੇ ਕਿ ਨੇ ਸਮਝਾ ਜੀ ਉਰਦੂ ਬੋਲਦੇ ਨੀ ਹੂੰ ਹੂੰ ਉਹ ਛੇੜਿਆ ਤਾਗਲਾ ਹਾਂਜੀ ਹਾਂ ਅੱਗੇ ਤਾਂ ਥੋੜੀ ਜਾਨ ਮੈਂ ਚੋਰੀ ਕਰਕੇ ਲੈ ਆਂ ਮੈਂ ਤਾਂ ਬਾਅਦ ਗਿਆ ਆਂ ਕਹਾਂ ਗਿਆ ਜੀ ਉਹ ਫੇਰ ਕਹਿੰਦੇ ਫੜਿਆ ਜਾਵੇ ਤੂ ਇਹਨੂੰ ਕੋਈ ਪੁੱਛ ਲਵੇ ਭਾਈ ਕੀ ਕਰਦਾ ਭਾਈ ਉਹ ਕਰਦਾ ਹਾਂ ਅੱਜ ਕੱਲ ਜੁੜੀ ਬੋਲੋ ਕਾਜੀ ਬੋਲੋ ਬੋਲੋ ਉਹ ਕਹਿੰਦਾ ਵੇਦਾ ਹੌਲੀ ਹੌਲੀ ਹੌਲੀ ਉਹ ਕਹਿੰਦਾ ਵੇ ਸਾਧੂ ਜੀ ਆਗੇ ਕਹਿੰਦਾ ਭਈ ਇਹ ਤਾਂ ਮਰਾ ਓਕਾ ਰੂਹ ਸੁਣ ਹੋਦੀ ਜੇ ਪ੍ਰਸਾਦ ਤੂੰ ਪਾਵਾਂ ਸਾਚ ਸਾਚ ਬੋਲ ਸਕਦਾ ਹਸਣਾ ਬੰਨਿਆ ਝੂਠ ਦਾ ਕੀ ਕੰਮ ਉਹੀ ਗੱਲ ਕਹਿ ਰਿਹਾ ਸੀ ਮਨ ਬੋਲੇ ਤੂੰ ਤਾਂ ਸੰਰਾਚ ਉਹਦੇ ਨਾਲ ਉਹਦੇ ਵਰਗਾ ਹੀ ਹੋ ਜਾ ਉਹਦੇ ਹੀ ਵਰਗਾ ਹੋ ਜਾ ਰਚੂ ਵਿੱਚ ਜਿਆਦਾ ਜਿਆਦਾ ਉਹਦਾ ਹੀ ਰੂਪ ਹੁੰਦਾ ਹੈ ਬੱਚੇ ਪਤਾ ਹੀ ਨਾ ਲੱਗੇ ਤੇਰਾ ਰੋਦਾ ਬੇਪਛਾਣ ਹੋ ਜਾ ਜਿਵੇਂ ਦੁੱਧ ਵਿੱਚ ਪਾਣੀ ਪਾ ਦਈਏ ਨਾ ਅੱਡ-ਅੱਡ ਪਏ ਹੁੰਦੇ ਨੇ ਫੇਰ ਇੱਕੋ ਹੀ ਹੋ ਜਾਂਦੇ ਨੇ ਦੁੱਧ ਵਿੱਚ ਪਾਣੀ ਮਿਲਾ ਦਈਏ ਜਿੰਨਾ ਜ ਜਿੰਨਾ ਜ ਰਿਹਾ ਨਹੀਂ ਹੈ ਪਾਣੀ ਦੁੱਧ ਚ ਉਹਨਾਂ ਜਰਾ ਅੱਡਾ ਹੋ ਰਾਜ ਕੀ ਹੋਵੇ ਤੇ ਸਾਦਾ ਹੀ ਦੁੱਧ ਹਨਾ ਹੈ ਦਾ ਦੁੱਧ ਪਤਲਾਗਾ ਤੇ ਅਰਜਲ ਪਤਲਾਗਾ ਜਿਹਨਾਂ ਗਾਇਆਂ ਦਾ ਦੁੱਧ ਹੈ ਪਤਲਾਗਾ ਹੈ ਦਾ ਦੁੱਧ ਬੱਜੂ ਦਾ ਦੁੱਧ ਹੈ ਹਾਂਜੀ ਜੇ ਪ੍ਰਸਾਦ ਸਭ ਦੀ ਗਤ ਹੋਏ ਜੇ ਪ੍ਰਸਾਦ ਸਭ ਦੀ ਗਤ ਹੋਏ ਸਭ ਕੀ ਗਤਾਂ ਪੀਆ ਕਿ ਕੋਈ ਵੀ ਦੁਨੀਆ ਦੀ ਮਤ ਹੋਵੇ ਇਹ ਮਤ ਸਾਰਿਆਂ ਤੋਂ ਉੱਤਮ ਨਾਨਕ ਜਾਪ ਜਪੇ ਜਪ ਸੋਏ ਨਾਨਕ ਜਾਪ ਜਪੇ ਸਿਰਫ ਸੋ ਐਸਾ ਜਾਪ ਜਪਣਾ ਚਾਹੀਦਾ ਕੋਈ ਦੁਨੀਆ ਦਾ ਬਦਾਰ ਕੋਈ ਮਤ ਵਾਲਾ ਜੋ ਤੇ ਰੰਗ ਚੜੇ ਉਹਦਾ ਤੇਰੇ ਤੇ ਨੁਸਖਾ ਐਸਾ ਜਾਪ ਜਪਣਾ ਚਾਹੀਦਾ ਕਿ ਦੁਨੀਆ ਦੀ ਕਿਸਮਾ ਚ ਵੀ ਆਪਣਾ ਰੰਗ ਕਰਦੇ ਥੋੜੇ ਜਿਹੇ ਦੂਏ ਪ੍ਰਚਾਰ ਕਰ ਰਹੇ ਨੇ ਪੁਰਾਣੇ ਇਹ ਆਪਣੇ ਮੱਤ ਦੇ ਉੱਤੇ ਗੁਰਮਾ ਤੋਤੇ ਰੰਗ ਧੂਆ ਛੜਵਾ ਲਿਆ ਜਿਨ੍ਹਾਂ ਨੇ ਧੂਆ ਰੰਗ ਛੜਵਾ ਲਿਆ ਜਿਨ੍ਹਾਂ ਨੇ ਜਾਪ ਸ਼ੁਰੂ ਕਰਤਾ ਵਾਹਿਗੁਰੂ ਦਾ ਪੁਰਾਣੇ ਤਾਂ ਫਿਰ ਇਹ ਨੂੰ ਕੋਈ ਦੱਸ ਦਰਸਾਤਾ ਨਹੀਂ। ਜਦਾਂ ਮਰਦਾ ਉਹ ਮਤਲਬ ਤੇ ਸਹੀ ਸਾਡੇ ਵਾਲੀ ਗੱਲ ਹੈ। ਉਹਦਾ ਰੰਗ ਅਸੀਂ ਕਬੂਲ ਲਿਆ। ਜਿਹਨਾਂ ਨੇ ਕਬੂਲ ਕੌਣ ਸੀ ਸਿੱਖ ਸੀ? ਅਸਲ ਕਿ ਮਤਲਬ ਉਹਨਾਂ ਦੀ ਹੋ ਰਾਮ ਰਾਮ ਵਾਲੀ। ਇੱਧਰ ਆ ਕੇ ਉਹਦਾ ਰੰਗ ਆਪਣੀ ਦਾ ਇੱਥੇ ਚੜ੍ਹਦਾ ਉਹ ਪ੍ਰਚਾਰ ਕਰਦਾ। ਗੁਰਬਾਣੀ ਤੇ ਸ੍ਰੀ ਕਾੰਗੜ ਹੈ। ਸਭ ਸਿਰ ਉਹਨਾਂ ਦੇ ਮੱਥ ਯਾਨੀ ਅੱਜ ਸਾਡੇ ਇਹ ਬਿਲਕੁਲ ਸਪਸ਼ਟ ਹੈ ਸਾਰੇ ਉਦਯੋਗੀਆਂ ਵਾਲੇ ਕਿ ਜੋ ਇਹ ਸਾਡੀ ਕੀਤ ਹੈ ਇਹਦੇ ਤੇ ਜੋਗ ਮਤ ਦਰਸ਼ਨ ਹੈ ਯੋਗ ਦਰਸ਼ਨ ਕਹਿੰਦੇ ਹਾਂ ਯੋਗ ਦਰਸ਼ਨ ਦਾ ਪ੍ਰਭਾਵ ਯੋਗ ਦਰਸ਼ਨ ਦੇ ਅਨਸਾਰ ਇਹਦੇ ਅਸਰ ਕੀਤੇ ਹੋਏ ਇਹਦਾ ਮਤਲਬ ਉਹ ਸਾਡੇ ਕੋਲ ਚਦ ਕੋਲ ਉਥੇ ਸਾਬਸ ਨੂੰ ਸੀਸ ਢੀ ਕਰਦੀ ਪੀੜੀ ਚੋਂ ਅੰਪਰਸਰ ਉਹ ਹੈ ਰਿਹਾਰ ਉਸ ਦੌਰਾਨ 80 ਕੁ ਤੋਂ ਬਾਅਦ ਹੋਇਆ ਸਾਂਝੂ ਤੋਂ ਬਾਅਦ ਸੀ ਸਾਂਝੂ ਬੇਦੀ ਹਾਂ ਆ ਗਿਆ ਸਾਂਝੂ ਬੇਦੀ ਆ ਗਿਆ ਅਕਾਲੀ ਫੋਲਾ ਸੇ ਉਹ ਹੋ ਕੇ ਆ ਗਿਆ ਸਾਂਝੂ ਬੇਦੀ ਨੇ ਨੇ ਜੀ ਸਤਿ ਆਲੋ। ਪੁਰਾਣਾ ਯਾਬੀ ਫਿਰ ਰਫਾਉ ਸੰਸਬੇ ਜੀ ਨਾ ਲੋਕਾਂ ਦਾ ਡਕਾ ਕੇ ਰਖਣ ਸੀ। ਹਾਂ। ਕਾਹਦਾ ਗੁੱਸਾ ਹੋ ਕੇ ਚਲਾਇਗਾ ਫਿਰ ਦਿਨੇ। ਬੇਜ਼ੀਦਾ ਪ੍ਰਭਾਵ ਸੀ ਨਾ ਪਰ ਇਹ ਉਧਰ ਇਧਰਲੇ ਪਾਸੇ ਹੁਸ਼ਿਆਰ ਪਰ ਗੁਰਦਆਸਰ ਹੂੰ। ਬਹੁਤ ਵੀ ਬੇਜ਼ੀਦਾ ਪ੍ਰਭਾਵ ਆਵਲਾਤੀ ਪਰ। ਹਾਂ ਜੀ। ਇਧਰਲੇ ਪਾਸੇ ਦੂਏ ਸੀ ਕਿ ਅਸਲੀ ਚੰਨਾ ਪ੍ਰਭਾਵ ਸੀ ਬੁਟਾਲੇ ਪਰ ਇਹ ਜਿੱਥੇ ਗੁਰਨਾਦ ਕਰੇ ਸੀ ਨੀ ਕਰਨਾ ਜੁੜ ਕੇ ਫਿਰ ਉੱਥੇ ਆ ਕੇ ਖਡੂਰ ਸਾਹਿਬ ਉਹਦੇ ਦੂਏ ਦੇ ਬੁੱਢੇ ਮਿਲ ਉਹਨਾਂ ਨੇ ਜੁੜ ਕੇ ਤਲਾ ਬਣਉਂਦੇ ਚਲੇ ਗਏ ਨਾ ਆਪਣੇ ਹੂੰ ਬੰਦੇ ਬੰਦੇ ਚਲੇ ਗਏ ਦੂਸਾ ਉਹ ਗੁਰਉੰਦ ਦੇ ਬੁੱਢੇ ਮਿਲ ਗਏ ਨਾ ਫਿਰ ਉੱਥੇ ਆ ਕੇ ਫਿਰ ਦੂਏ ਗੁਰੂ ਅਰਜਨ ਦੇ ਬੁੱਢੇ ਮਿਲ ਗਏ ਨਾ ਉਹ ਸਾਰੇ ਇਕੱਠੇ ਹੋ ਗਏ ਥਨੇ ਗਰੁੱਪ ਉਹ ਸਾਰੇ ਗਰੁੱਪ ਇਕੱਠੇ ਹੋ ਗਏ ਹੋ ਗਿਆ ਹੈ ਨਹੀਂ ਲਾ ਪਈ ਮਨ ਮਨ ਇਹ ਨਾਲ ਬੰਦ ਬੰਦ ਘਾਟ ਹੋ ਗਿਆ ਉਹ ਤੇ ਆਪਣੇ ਪਟਾੜੇ ਨਾ ਸੌਰੀ ਆਪਾ ਤੋਂ ਪਟਾੜੇ ਉੱਥੇ ਜੋੜਤੀ ਉਹ ਭੋਰਾ ਉਥੇ ਭੋਰੇ ਦੀ ਕਹਾਣੀ ਜੋੜਤੀ ਭੋਰੇ ਦੇ ਬੱਚੇ ਤਾਪਕੀ ਤੇ ਸਾਰਾ ਚੁੜੇ ਜਿਹਾ ਤੇ ਅਰਦਾਸ ਇਹ ਤੋਏ ਜਲਿਆਂ ਚ ਗੁਰਦਾਸਪੁਰ ਅਰਬ ਉਸਰ ਸਾਰੇ ਜੂਠੇ ਤੇ ਦੋਬੇ ਯਾਰਾ ਪ੍ਰਚਾਰੀ ਗੁਰੂ ਘਰ ਦਾ ਦੋਬੇ ਪ੍ਰਚਾਰੀ ਕੋਈ ਗੁਰੂ ਘਰ ਦਾ ਬਹੁਤਾ ਪ੍ਰਚਾਰਕ ਕੋਈ ਤਾਂ ਅਸੀ ਗੁਰਦੋਰਾ ਹੀ ਹੋ ਹੈਗਾ ਹੈ ਬਟਾਲਾ ਹੋਇਆ ਗੁਰਦਾਸਪੁਰ ਨਾਲਿਆਂ ਪਰਸਰ ਦੇ ਉਹ ਪੱਲੇ ਪਾਸੇ ਹਾਂ ਗੁਰਦਾਸਪੁਰ ਇਹ ਤੱਕ ਕੀ ਹੈ ਵੀ ਹੁਣ ਵੀ ਆ ਖਦਾ ਜਿਤ ਗੁਰਦਾਸਪੁਰ ਸਾਈਡ ਉਧਰ ਸ਼ਿਸ਼ਾ ਆ